ਜਾਪੋ ਆਦੇ ਸੱਚ ਜੁਗਾਰੇ ਸੱਚ ਮੈਂ ਕਹੀ ਸੱਚ ਨਾਨਕ ਹੋਸੀ ਸੱਚ ਸੂਜੈ ਸੂਤ ਨਾ ਹੋਈ ਜੇ ਸੋਚੀ ਲਖਦਾਰ ਸੂਤੈ ਜੋਤ ਨਾ ਹੋਈ ਜੇ ਲਾਏ ਰਹਾ ਨਿਵਤਾਰ ਕਿਉਂ ਤਾ ਦੋਤ ਨਾ ਉਤਰੀ ਜੇ ਬੰਨਾ ਪਰੀਆ ਪਾਰ ਸਹੇ ਕੀੜਤਾ ਲਖੂ ਹੂ ਹਿੰਤਾ ਇੱਕ ਨਾ ਚੱਲੈ ਨਾਲ ਜਿੰਦ ਜਿਆਰਾ ਹੋਈਆ ਜਿੰਦ ਕੂੜਾ ਸੁੱਤੇ ਪਾਲੂ ਤੁਮ ਰਜਾਈ ਚੱਲਣਾ ਨਾ ਲਿਖਿਆ ਨਾਲ ਕਿਵੇਂ ਚਿਆਰਾ ਹੋਈਐ ਕਿਉਂ ਕੂੜਾ ਸੁੱਤ ਪਾਲੂ ਉਪਮਰ ਜਾਈ ਚੱਲਣਾ ਨਾਮਿਤ ਲਿਖਿਆ ਨਾਲ ਵਾਹਿਗੁਰੂ ਦਾ ਹਰਤੋ ਵਾਹਿਗੁਰੂ ਸਭੀ ਸਾਧਨੀਆਂ ਦੀ ਦੂਰੋਂ ਦੂਰ ਤੱਕ ਮੋਰੀ ਜੀ ਸੰਤ ਜੀ ਨਾਮ ਲਟ ਕੇ ਉੱਤੇ ਪਾਚਾ ਮਨੋਂ ਹੈ ਜਿੰਮੇ ਮਨੇ ਕਿ ਹਮੇ ਕੈ ਲਿਵੇ ਸਮੇਵਾ ਅੰਦਰ ਜੀ ਮੇਰ ਕਰਕੇ ਸਤ ਨਾਮ ਦਾ ਜਾਪ ਜਪਾ ਕੇ ਬਾਉਂ ਜੀ ਜੀ ਅੰਦਰ ਸ਼ਾਂਤੀ ਬਖਾਈ ਦਾ ਬਵਾ ਕਰਨੀ ਦੀ ਜੇ ਬਾਤ ਕਰਨੀ ਜਿਹੜੇ ਬੜੇ ਬੜੇ ਹੰਕਾਰੀ ਸਨ ਮਨੁੱਖ ਦੇ ਦੇਵਤੁਰ ਵਰਗੇ ਆਪ ਨੂੰ ਖਾਣੇ ਸਮੇਂ ਜਿਨ੍ਹਾਂ ਨੂੰ ਸਤਿਗੁਰੂ ਦੀ ਸ਼ਕਾਇਰ ਕਰਨਾ ਚਾਹੀਦਾ ਹੈ ਜੀ ਉਹਨਾਂ ਨੂੰ ਵੀ ਸਮਝ ਦੇ ਕਿਸੇ ਬਖਸ਼ਾਈ ਨੇ ਕਿਸ ਤਰ੍ਹਾਂ ਕਰਕੇ ਹਰੇਕ ਬੰਦੇ ਨਾਲ ਦੀ ਨੂੰ ਲੈ ਕੇ ਸਤਿਗੁਰੂ ਸਾਹਿਬ ਨੇ ਨੂੰ ਇਹ ਵੀ ਕਰਨਾ ਜਗਨ ਬਾਦਖਾਲ ਨੇ ਸਭ ਤੋਂ ਵੱਧ ਦੇਈ ਨੂੰ ਨਾ ਉਤੰਗੂਤੀ ਉਹ ਬੁੱਧ ਕਾਨੂੰਨ ਨੇ ਸਾਨੂੰ ਅਜੇ ਦੇ ਕਿਸੇ ਸੰਸਕ੍ਰੀ ਯਾਤ ਸੰਦੇਸ਼ਾਂ ਨੇ ਉਹਨਾਂ ਦੇ ਮੁਖ ਵਿੱਚ ਗਊਦੇ ਅਸਟੇਨ ਕਾ ਤੇ ਲਾਦੇ ਸਮੇਂ ਹੀ ਕੀ ਕਹਿਣਾ ਕੰਮ ਕਰਦੇ ਸੰਗ ਇਹ ਜੇ ਯਾਦ ਮਾ ਇਸੇ ਪ੍ਰਕਾਰ ਹੱਦੀਆਂ ਆਲਗਾਂ ਨੂੰ ਬਣੇ ਨਾ ਜਿਹੜੇ ਯਾਰਣ ਜੀ ਨੇ ਸੁਧਾਰ ਕੇ ਸਭ ਨਾਲ ਵੀ ਦੇ ਨਾਲ ਸੰਗਮ ਨਿਸ਼ਚਿਤ ਕਰ ਦਿੱਤਾ ਮੋਹ ਮੰਗਾ ਜੀਵਨ ਬਾਰੇ ਜਿਹਨਾਂ ਦਾ ਅਰਬੀ ਤੋਂ ਨੇ ਬੋਲੀ ਵਾਲੇ ਉਹਨਾਂ ਨੂੰ ਵੀ ਸੇਵਾ ਕਰਾਈ ਨੂੰ ਜੋੜੀਆਂ ਸਦਾਰ ਤੇ ਜੈਸੀ ਜੀਵਾਂ ਦੇ ਮੂਲ ਦੇ ਬਨਾਮ ਜਿਹੜੇ ਸੱਜਣ ਖਾਣ ਵਾਲੇ ਦੇ ਸਾਹਮਣੇ ਜਿਹਨੇ ਆਜੇ ਸੰਗੀਆਂ ਦੇ ਲੈਂਦੇ ਸਰ ਉਹਨਾਂ ਨੂੰ ਵੀ ਸੇਵਾ ਕਰਾਈ ਨੇ ਚੰਗੇ ਜੇ ਕੋ ਅਗਲੀ ਸੱਜਣਾਂ ਆਪ ਦਾ ਸੇਵਾ ਕਰਾਈ ਇਹ ਹਿੰਦੂ ਜੀ ਦੇ ਲੋਕ ਉਹਨਾਂ ਨੂੰ ਜਨੇ ਨਹੀਂ ਜਾਣਗੇ ਦਾਦ ਜੀ ਨੇ ਆਪ ਸੰਸਾਰ ਦੀ ਪ੍ਰਿਆਨ ਕਰਨ ਦੇ ਰਾਸ ਤੇ ਲੱਖਾਂ ਯਾਨੀ ਨਾਲ ਦੀ ਗਾਲ ਦਿੱਤੀ ਸੰਨਾ ਦੇ ਬ੍ਰਹਮਣਾਂ ਵਿੱਚ ਬਾਰੇ ਜਿਸ ਨੂੰ ਕਿਸੇ ਨੇ ਸਤਨਾਪਰ ਜਮਨਤ ਆਇਆ ਕੇ ਫਾਰੀ ਜੀ ਉੱਤੇ ਹੋਈ ਸੀ ਉਹਦੇ ਤੋਂ ਜੀ ਨੇ ਯਾਰੇ ਗਾਇਂ ਧਰਮ ਦੇ ਚਾਰ ਨੇ ਜਹਾਂ ਵਰਨ ਨਹੀਂ ਕੋ ਸਿੱਖੀ ਦੇ ਵਿੱਚ ਪ੍ਰਕਾਸ਼ ਦਾ ਸਿੱਖ ਜੀ ਨੇ ਐਸੀ ਤਕਦੀਰ ਕੀਤੀ ਕਿ ਜਿਉਂ ਜਾਵੇ ਦਾਣਿਆ ਉਹ ਤਕਰੀਰ ਦਾਦਾ ਜੀ ਦੀ ਨਹੀਂ ਹੋ ਇਤਨਸ ਨੂੰ ਨਹੀਂ ਆਉਣੀ چاہیے ਆਸਰ ਜੀ ਸਾਥੰਗੀ ਦੀ ਵੀ ਨਹੀਂ ਸੁਣ ਕੇ ਆਈਓ ਬਹੁਤ ਸੰਤਾਂ ਬੋਲ ਕੇ ਨਾ ਆ ਸਕੀ ਕੋਈ ਜਿਸ ਵਿੱਚ ਇਹੀ ਜੋਤਿ ਨੂੰ ਜੇ ਪਹਿਲਾ ਦਰਸ਼ਨ ਕਰਨ ਆ ਬਹੁਤ ਬ੍ਰਿਜ ਦੀ ਸ਼ਕਤੀ ਸੀ ਐਸੀ ਬਰਕਤੂਨ ਹੋਗੀ ਹਰ ਮਸਾਲ ਦੀ ਕਿਸਾਨਾਂ ਦੂਰ ਨੇੜੇ ਵਾਲੇ ਛਿਦਿਆਂ ਗੁਰੂ ਘਰ ਦਾ ਇਹ ਜੋਤਿ ਕੋ ਸਮਰੰਦਰ ਸਵਾਲ ਦਾ ਸੁਣ ਕੇ ਉਹਨਾਂ 'ਨ ਵੀ ਹਿੰਮਤ ਹੋਊਗੀ ਨਾਲੇ ਉਹਨੂੰ ਦੇ ਜਸਨੀ ਗੱਲ ਪਾਤ ਤੋਂ ਸੰਗਰਾਣੇ ਇਹ ਵੀ ਜੇਤੇ ਨਾ ਦਾ ਸਾਹ ਦੇ ਜਨਮ ਪਹੁੰਚੇ ਸਾਰੇ ਜੈ ਸਿੰਘ ਕਲਕੇ ਨੂੰ ਹਾਲ ਹੋ ਰਿਹਾ ਹੈ ਸਾਰੇ ਸਮਾਜੀ ਸਾਰੇ ਨੀਅ ਖਨੀਏ ਕਲਕੇ ਜਿਹੜੀ ਅਸੀਂ ਉਹ ਹਿੱਲੇ ਨੂੰ ਹਟਦੀ ਹੈ ਚੱਕਰ ਮਹਾਰਾਜ ਸਾਹਿਬ ਸਾਰੇ ਵੇਖੀ ਲੱਗੇ ਸੱਗੀ ਹੈ ਅੱਜ ਵੀਰ ਜੀ ਨੂੰ ਹਦੀ ਦੇ ਸਾਥ ਸੰਗਾਂ ਦੇ ਹੈ ਅੱਜ ਇਹ ਅੰਮ੍ਰਿਤ ਵੇਲੇ ਨੂੰ ਜੀਣੇ ਦੇ ਸੰਦੇਸ਼ ਦੇ ਕਹਿੰਦੇ ਜਾਈ ਹੁਣ ਸਾਡੇ ਜੋਤਿੰਦੁਰ ਸਮਾਉਂ ਦੇ ਸਮਾਹ ਹੈ ਕੋਈ ਚੰਗਾ ਨਹੀਂ ਬੱਤ ਨੂੰ ਕਿੱਥੇ ਫੇਰ ਰੋਣ ਇਸ ਤਰ੍ਹਾਂ ਦੇ ਵਾਰ ਕੇ ਕਿ ਜੀ ਦੀ ਦਿੱਖਾਂ ਵਿੱਚ ਜੇ ਕਿਸੇ ਨੂੰ ਭਾਈ ਸਾਡੇ ਨਾ ਸ਼ੋਰ ਨਹੀਂ ਕਰਨਾ ਸਾਰੇ ਮੰਮੀ ਨੂੰ ਕਹ ਜੀ ਨੂੰ ਜੀ ਦੀ ਨੂੰ ਕਿਸੇ ਇਹ ਜਦੋਂ ਖੁੱਲ ਕੋਈ ਤੇ ਦੀਆਂ ਮੇਰਾ ਇਹ ਜਨਮ ਦਾ ਸੁੱਤ ਪਾਇਆ ਤੇ ਉਹ ਚਾਹਣੇ ਹੈ ਕਿ ਪੀੜਾ ਅਕੰਡ ਦੇ ਜਨਮ ਮੰਨ ਦਾ ਦੇਖ ਵੇਖਣਾ ਇਹ ਤੇਰ ਕਾ ਕੋ ਸਾਣ ਦਿੱਤਾ ਹੈ ਇਸ ਜਨਮ ਦੇ ਨਾਲ ਸਾਹਿਬ ਸੰਗੇ ਜੀ ਦੇ ਜਨਮ ਮੰਨ ਦਾ ਸੋਖਿਆ ਦਿਆ ਹੈ ਤੇ ਜਨਮ ਦੇ ਨਾਮ ਮਿਲਾਦ ਜੁਨੀਆ ਦੀ ਚੱਕਿਆ ਗਿਆ ਹੈ ਲੋਕਾਂ ਮਤ ਕੋ ਇਹ ਲੋਕੋ ਕਿ ਜਿਸ ਪਕੜ ਵਿੱਚ ਨਾ ਪਾਏ ਇਹੋ ਖਾਰੀ ਕਿ ਨਾ ਪਾਏ ਇੱਕ ਲਖਮਣਿਆ ਕਰੇ ਕਰਕੇ ਜਿਨ ਲਕੜੀਆਂ ਦੇ ਰੱਤੀ ਨਾਮ ਨਾਲ ਸਾਰੇ ਕਾਪ ਨਾਸ ਹੋ ਜਾਣੀ ਪਰਮੇਸ਼ੁਰ ਦੇ ਨਾਮ ਦੀ ਯੋਗ ਰੱਖੋ ਕੋਈ ਵੀ ਪ੍ਰਕਾਰ ਦੀ ਟੇਕ ਨਹੀਂ ਰੱਖਣੀ ਜਿਸ ਤੋਂ ਬਾਅਦ ਆਉਗੇ ਟੰਡ ਭਰਾਉਣ ਵਾਲੇ ਕੀ ਆਗੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਹਾਂ ਦੇ ਪਤਣਾ ਬਾਦ ਦਿੱਖ ਜਾਂਦੇ ਹੈ ਜਿਹੜਾ ਬਾਤਬਾਰੀ ਤੇਰੀ ਸਾਰੀ ਆਸ ਕੀ ਆਂਦੇ ਹੈ ਮਾਰੇ ਪਿੰਡ ਪਤਲ ਮੇਰੇ ਕਿਥੇ ਕਰਿਆ ਸੱਚ ਨਾਮ ਕਰਤਾ ਹੋਰ ਜੇ ਸਾਡੇ ਪਿੰਡ ਕਰਨੀ ਇਹ ਸੱਚਾ ਨਾਮ ਜਿਹੜਾ ਜਦੋਂ ਇਹ ਮੇਰੇ ਸਾਡੇ ਪਿੰਡ ਕਰਨੀ ਚਾਹੀਦੀ ਆ ਦੇ ਲੋਕ ਹਰ ਵੀ ਆਲ ਕੋਲੋਂ ਪਿੰਡ ਪਰਦੇ ਆ ਇਹ ਸੱਚਾ ਨਾਮ ਜਦੋਂ ਸਾਡੇ ਇਹ ਪਿੰਡ ਕਰਨੀ ਅਤੇ ਪਿੰਡ ਪਤਲ ਸੱਚ ਨਾਮ ਕਿੰਦੇ ਪਤਨ ਮੇਰੀ ਕੇਸੇ ਰਜਣਾ ਨਾ ਨਾ ਸਾਡੇ ਕੰਧ ਪਰਨੇ ਤੇ ਜਿਹੜਾ ਪੱਤੇਆਂ ਜਿਹੜੀਆਂ ਆ ਨਗਰੇ ਸ੍ਰੀ ਸ਼ਾਂਤ ਹੋਏ ਤੇ ਬਾਜ ਪੱਤੇ ਕੰਧ ਪਰ ਦੇ ਕੱਤੇ ਕੰਦੇ ਉਹ ਸੱਚਾ ਨਾਮ ਹੈ ਅਤੇ ਕਿਰਿਆਦਾਰੀ ਕੋਈ ਸਰਕਾਰ ਜਾਂ ਸਾਡਾ ਨਾਮ ਨਾਲ ਚੱਲਦੀ ਇੱਥੇ ਇੱਥੇ ਆਂਦੇ ਕੱਥੇ ਮੇਰਾ ਆਧਾਰ ਆਸ ਲੋਕ ਦੀ ਉਥੇ ਪ੍ਰੇਰਣੇ ਦੀ ਅੱਗੇ ਦੁਨੀਆਈ ਦੀ ਦੇ ਦੇ ਪ੍ਰਲੋਕੀ ਚੀ ਹੈ ਇਸ ਲੋਕ ਕਿਥੇ ਵੀ ਸਾਦਾ ਆਸਰਾ ਇੱਕ ਨਾਮ ਹੀ ਹੈ ਅਸੀਂ ਨਾਮ ਤੋਂ ਵਗੈ ਹੋਰ ਕੋਈ ਕੋਈ ਨਹੀਂ ਰੱਖੀਏ ਸਰਦੀ ਦੇ ਪਾਤ ਜੀ ਵਜਨ ਚੀਤੇ ਇਥੇ ਉਥੇ ਆਂਦੇ ਪਾਠੇ ਮੇਰਾ ਆਧਾਰ ਅੱਗੇ ਟਿਕ ਲੋਕੀ ਹਰ ਸੰਸਰੀ ਬ੍ਰਾਹਮਣ ਵਾ ਪਿੰਡ ਖਾਏ ਇਹ ਪ੍ਰਲੋਕ ਧਰਤੀ ਦੇਤੇ ਖਾਈਂ ਨੇ ਰੋਤੇ ਦੇ ਪਿੰਡ ਭੱਜੇ ਹਨ ਉਹ ਧਰਤੀ ਇਸ ਨੂੰ ਕੱਤੇ ਕਹਿੰਦੇ ਹਨ ਇਹ ਪਿੰਡ ਘਰ ਇੱਕ ਲੋਕੀ ਇੱਕ ਲੋਕੀ ਦੋ ਲੋਕ ਨੂੰ ਜਾਣ ਕਰਕੇ ਉਹ ਪੱਕੇ ਪਿੰਦ ਭਰਉਂਦੇ ਹਨਗੇ ਦੋ ਜਗਾਂ ਦੇ ਵਿੱਚ ਜਾਣ ਕੇ ਉਹ ਧਰਤੀ ਦੇ ਸਿੱਖੀਆਂ ਆਏ ਸਹੀ ਯਾਰ ਕੇ ਤੇ ਸੰਸਰੀ ਇਹ ਸੱਚੇ ਪਿੰਦ ਭਰਦੇ ਹਨਗੇ ਤੇ ਉਹ ਚਾਰ-ਤਰ ਬਾਅਦ ਦੁੱਖ ਲੱਗਿਆ ਹੁੰਦੀ ਹੈ ਇਸ ਰੋ ਜੇ ਨੂੰ ਖਾ ਦੇ ਕੇ ਤ੍ਰਿਪਤੀ ਜੇ ਤੁਸੀਂ ਕਰੋਗੇ ਉਹ ਤ੍ਰਿਪਤੀ ਟੁਕੜਾ ਵੀ ਕਿਵੇਂ ਕਰ ਸਕੋਗੇ ਮਹਾਰਾਜ ਆਖੇ ਬਸੋ ਕਿਵੇਂ ਤ੍ਰਿਪਤੀ ਹੋਵੇ ਮਹਾਰਾਜ ਕਹਿੰਦੇ ਨਾਨਕ ਪਿੰਡ ਬਖਸ਼ੀਸ ਦਾ ਕੰਮ ਉਹ ਸਾਡੇ ਕੋਲੇ ਪਿੰਡ ਭਾਈ ਭੰਨੇ ਇਹੋ ਜਿਹੜੀ ਪਰਮੇਸ਼ਰ ਦੀ ਬਖਸ਼ੀਸ ਹੈ ਉਹ ਨਰਮ ਨਹੀਂ ਸਾਡੇ ਪਿੰਡ ਕਰਨਾ ਕੰਮ ਨਖੂਰ ਜਿਹੜੇ ਕਦੇ ਮੁੱਕਣ ਵਾਲੇ ਨਹੀਂ ਹਨ ਇਹ ਉਦੇਸ਼ ਬਾਦੋ ਸਿੰਘ ਜੰਮਨੀ ਜੋਤੀ ਜੋ ਸਮਾਏ ਨਾਨਕ ਸਾਡੀ ਨਾਮ ਅਗੇ ਇਸੇ ਪ੍ਰਕਾਰ ਮਾਰਾ ਗੰਗਾ ਕੋ ਖੁੱਲ ਪਉਣ ਵਾਲੀ ਕਿਹ ਜਾਂਦੀ ਹੈ ਮਾਰੇ ਕਹਿੰਦੇ ਗੰਗ ਬਨਾਰੇ ਸੁਖੁ ਪੁਮਾਰੀ ਨਾਵਾ ਆਤਮਰਾ ਜੇ ਕੋਈ ਪਰਮੇਸ਼ਰ ਕੋਈ ਸੂਤ ਕਰੀ ਸਾਡੀ ਗੰਗਾ ਕੋ ਦੰਸ਼ੀ ਇਹ ਹੋਈ ਹੈ ਗੁਰੂ ਸਾਹਿਬ ਨੇ ਆਪਣੀ ਕਿਰਿਆ ਦਾ ਦੱਸਿਆ ਜੋ ਆਸਾ ਰਾਗ ਦੀ ਸ਼ਬਦ ਹੈ ਮਾਰੇ ਸਾਹਿਬ ਗਾਰੇ ਨੂੰ ਜਰਨ ਨੂੰ ਉਹ ਹੋਏ ਸਹੀਆਂ ਦੇ ਵਾਸਤੇ ਸੰਦੇ ਡੇਰਿਆਂ ਦੇ ਸ੍ਰੀਮਦ ਗਵਾਨ ਆਇਆ ਉਹ ਕਰਕੇ ਗਰੀਬ ਨਾਸ ਜੀ ਦਾ ਅਰਥਾ ਧਾਰ ਉਸ ਵੇਲੇ ਦਾਦਾ ਸ੍ਰੀ ਚੰਦ ਤੇ ਲక్ష్ਮੀ ਦਾਸ ਨੇ ਆ ਕੇ ਦੁਹਾਈ ਦਿੱਤੀ ਕਿ ਇਹ ਨਾਰਾਇਣ ਦੇ ਵਾਸਤੇ ਇਹੋ ਕਰੀਏ ਗਰੀਬਾਂ ਦੇ ਉਸ ਵੇਲੇ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਗੁਰੂ ਸਾਹਿਬ ਜੀ ਉਸਦੇ ਬੈਠ ਗਏ ਇਹ ਲੱਗੇ ਤੁਸੀਂ ਐਂ ਨਹੀਂ ਹੁਣ ਸਰਦਾ ਕਰਕੇ ਆਏ ਹੋ ਪਹਿਲਾਂ ਬੁਲਾ ਰਹੇ ਆਏ ਨਹੀਂ ਸੀ ਇਹ ਤੁਸੀਂ ਹੁਣ ਭਾਜਣਾ ਕਰੀਏ ਚਾਰ ਜਗ ਦੀ ਉਹਨਾਂ ਸਾਡੀ ਪ੍ਰਾਂਤ ਚਾਹੀਦੇ ਸੀ ਕਹਿੰਦੇ ਹੱਥ ਕੀ ਹੈ ਬਾਹਰੀ ਨਹੀਂ ਇਹ ਕਹਿੰਦਾ ਸੀ ਤੁਸੀਂ ਦੋ ਘੜੀਆਂ ਹੀ ਦਰਸ਼ਨ ਮੰਗਿਆ ਕਹਿੰਦਾ ਹੁਣ ਤੁਸੀਂ ਦੋ ਘੜੀਆਂ ਜੋ ਕੋਈ ਕਹਿਣੇ ਕਿੱਥਾ ਕਰਨੇ ਮੰਗਦੇ ਇਹਨਾਂ ਨੇ ਕਿਹਾ ਮਹਾਰਾਜ ਰੰਗੋ ਸਾਹਿਬ ਨੂੰ ਕਿੱਥੇ ਦੇਖਾਂ ਆਪਣੇ ਸਾਡੀ ਅਸੀਂ ਸੁਲਤਾਨ ਅਸੀਂ ਕੀ ਕਰਾਂਗੇ ਇਹਨਾਂ ਮਹਾਰਾਜ ਸਾਹਿਬ ਨੇ ਕਿਹਾ ਭਈ ਇਹ ਜਿਹੜੀ ਚੀਜ਼ ਹੈ ਜੋ ਗੁਰੂ ਅੰਗਦ ਸਾਹਿਬ ਨੇ ਘਰਨਾ ਕਰਕੇ ਪ੍ਰਾਪਤ ਕੀਤੀ ਹੈ ਉਹ ਨਿੱਕੀ ਸੀ ਕੀ ਹੋਈ ਨਹੀਂ ਸਾਰੀ ਸੰਗਤ ਨੇ ਪਰਕੋਦੀ ਗੁਰੂ ਅੰਗਦ ਸਾਹਿਬ ਦੀ ਨੂੰ ਬਖਸ਼ੀ ਹੋਈ ਹੈ ਇਹ ਕੋਈ ਸ਼ਬਦ ਦੀ ਬਾਤ ਗੁਰੂ ਅੰਗਦ ਸਾਹਿਬ ਦੇ ਕਰਨਾ ਕੋਈ ਪ੍ਰਾਪਤ ਕਰਦੇ ਕਿਉਂਕਿ ਉਹ ਤੁਸੀਂ ਕਰਨੀ ਹੈ ਅੱਜ ਤੁਸੀਂ ਰੀਤੀ ਰਿ습ੀਆਂ ਬਾਤ ਮਾਇਆ ਦਾਜ ਕਰਦੇ ਹੋ ਤਾਂ ਗੁਰੂ ਤੇ ਕੁੱਤੀਆਂ ਨਹੀਂ ਲੋਕ ਪੂਜਿਆ ਕਰਦੇ ਨੇ ਉਹ ਆਖੜਾ ਕਹਿੰਦੇ ਈਸੇ ਸਾਡੇ ਸਰੀਰ ਤੋਂ ਪੁੱਤਰ ਹੋਣੇ ਸਾਡੀ ਲੋਕ ਉਹਨਾਂ ਸੇ ਪਿਆਰ ਕਰਨਗੇ ਬੜੀ ਪੂਰੇ ਦਰੀ ਹੋਵੇਗੀ ਕੋਦਾ ਸੁਖਾਰ ਬੜਾ ਹੋਵੇਗਾ ਪਰ ਸਭ ਦੀ ਦਾਤ ਗੁਰੂ ਅੰਗਦ ਸਾਹਿਬ ਨੇ ਕਿ ਮਹਾਰਾਜ ਜੀ ਕੀ ਕਰਸਾਤਿ ਜੀ ਜੀ ਕੀ ਕੋ ਭਾਈ ਗੁੰਦੇ ਸਾਹਿਬ ਕਹੇ ਮਹਾਰਾਹ ਜੀ ਨੂੰ ਮੰਤਰ ਸੁਣਾਓ ਜੀ ਜੀ ਵਾਹਿਗੁਰੂ ਮੰਤਰ ਦੇ ਆਪ ਕਿਰਪਾ ਕਰਕੇ ਸੁਣਾਉਣਾ ਕੀਤੇ ਕਿਸੇ ਸੰਗਤਾਂ ਦੇ ਅੰਦਰ ਐਸਾ ਪਿਆਰ ਹੋ ਗਿਆ ਦੇਸ ਕਾਲ ਸਾਰਿਆਂ ਨੂੰ ਭੁੱਲ ਗਏ ਗੁਰੂ ਨਾਨਕ ਜੀ ਨੇ ਉਹ ਸਭ ਨੂੰ ਦਰਸ਼ਨੁੰਦਿਆ ਹੋਇਆ ਆਜ ਵੀ ਚਾਹੁੰਦਾ ਆਪਣੇ ਕੋ ਲੈ ਕੇ ਦਰਬਾਰ ਮਾਨ ਹੋਵੇ ਆਗੇ ਕਰਕੇ ਕਿ ਨਾਦਰ ਅੰਦਰ ਸਾਰੇ ਸ੍ਰੀ ਬਾਹਰ ਗਏ ਜਾਏ ਜੇ ਪ੍ਰਕਾਰ ਆਗਿਆ ਦਿੱਤੀ ਕਿ ਕਿਸੇ ਦੇ ਭਾਈ ਸਹਾਰਨੀ ਵੀ ਕਨਾਰ ਦੇ ਕੋਲ ਕੇਰੇ ਸ੍ਰੀ ਨੂੰ ਕਾਸ ਉਸ ਵਕਤ ਨੂੰ ਪਖਾਨ ਸਾਹਿਬ ਸਮੇਲੀ ਚੱਲ ਕੇ ਆ ਗਏ ਇਹਨਾਂ ਨੇ ਕਿਹਾ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ ਕਿ ਤੁਹਾਨੂੰ ਕੋਈ ਵਰਕਨ ਤੁਸੀਂ ਜੋਤੀ ਜੋ ਸਮਾਂ ਤੋਂ ਪਹਿਲਾਂ ਕਰ ਸਕਦੇ ਤੁਸੀਂ ਨੂੰ ਕੋਈ ਕਿਉਂ ਨਹੀਂ ਆਇਆ ਉਹਨਾਂ ਦਾ ਮਾਰਾ ਜੋਤੀ ਜੋ ਸਮਾਵੇ ਹੈ ਇਹਨਾਂ ਨੇ ਸੱਤਰ ਤੋਂ ਕਹੇ ਲੱਗੇ ਅਸੀਂ ਬਾਹਰੀਆਂ ਗੱਲਾਂ ਨਹੀਂ ਜਾਣਦੇ ਜਿਹਨੂੰ ਤੁਸੀਂ ਆਪਣੇ ਗੁਰੂ ਜਾਨ ਕੋ ਪਾਸ ਜਾਣਾ ਅਸੀਂ ਸਾਡੇ ਵੀ ਪੀਰ ਹਨ ਅਸੀਂ ਇਹਨਾਂ ਦੇ ਪਾਸ ਜਾਵਾਂਗੇ ਇਹ ਸੰਕਰ ਕੇ ਸਾਡ ਹਿੰਦੂਆਂ ਦੀ ਸੱਤਰ ਜਾ ਪਕੜੇ ਜੇ ਕੋਈ ਸਿਆਣੇ ਸਿੱਖਾਂ ਨੂੰ ਵਸਦੇ ਉਹਨਾਂ ਨੂੰ ਕਹੇ ਵੀ ਝਗੜਾ ਨਾ ਪਾਓ ਗੁਰੂ ਸਾਹਿਬ ਦਾ ਆਦੇਸ਼ ਹੈ ਉਹ ਸਭ ਕਿਸਾਨ ਸੇਵਕੀ ਗੁਰੂ ਸਾਹਿਬ ਦਾ ਹੁਕਮ ਲਿਆ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਵਾਰੀ ਕਿਉਂ ਲਿਖਿਆ ਗੁਰੂ ਸਾਹਿਬ ਨੇ ਇਹ ਵਾਅਦਾ ਕੀਤਾ ਦਾਦਾ ਨਾ ਘੂਰ ਨਾ ਨੜੀ ਨਾ ਮੱਤ ਨਾ ਦਾਦਾ ਜੀ ਅੰਗਰ ਦੇ ਹੀ ਇਹ ਕਿਹਾ ਹੁੰਦੀ ਹੈ ਕਿ ਅਸੀਂ ਨਾ ਤਾਂ ਕਬਰ ਵਿੱਚ ਹਾਂ ਤੁਸੀਂ ਸਾਨੂੰ ਮਗਲ ਚ ਪਜਾਇਆ ਚਾਹ ਨਹੀਂ ਤੇ ਮੈਂ ਅਸੀਂ ਮਿੱਟੀਆਂ ਵਿੱਚ ਹਾਂ ਜਿਵੇਂ ਹਿੰਦੂ ਮਿੱਟੀਆਂ ਲਗਾਉਂਦੀ ਹੈ ਤੇ ਮੈਂ ਅਸੀਂ ਕਿਸੇ ਪ੍ਰਕਾਰ ਮਤਾਂ ਵਿੱਚ ਜਿਵੇਂ ਜੋ ਵੀ ਮਤ ਬਣਾ ਕੋਈ ਵੀ ਹੈ ਅਸੀਂ ਤਾਂ ਗੁਰੂ ਅੰਗਦ ਸਾਹਿਬ ਦੇ ਸ਼ੇਖੀ ਵਿੱਚ ਜੋ ਮਾਜਿਸਾ ਨੂੰ ਕਹਿ ਸੁਣ ਕੇ ਸਾਰੇ ਪ੍ਰਸੰਨ ਹੋ ਗਏ ਤੇ ਮਾਜਿਸਾ ਕੋ ਤੰਗਣੀ ਹੋਈ ਸੀ ਕਹਿੰਦਾ ਤੀ ਸਭ ਮੇਰੇ ਹੋ ਕੇ ਦਰਸ਼ਨ ਕਰਨ ਲੱਗੇ ਜੋ ਦਰਸ਼ਨ ਕਰਨ ਲੱਗੇ ਭਾਈ ਮਨੀ ਸਿੰਘ ਸਾਹਿਬ ਨੇ ਕਿਹਾ ਸਿੰਧੀਆਂ ਦੇ ਮੁਸਲਮਾਨਾਂ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਖੁੱਲ੍ਹ ਲਿਆਓ ਮਹਾਰਾਜ ਜੇ ਉਹ ਜੀਵੇ ਸੌਲਕ ਮਾ ਜਾਣ ਉਹਨਾਂ ਨੂੰ ਆਗਿਆ ਨਹੀਂ ਉਹਨਾਂ ਦੇ ਤਰੀਕੇ ਦੇ ਨਾਲ ਵੀ ਤੁਸੀਂ ਮਹਾਰਾਜ ਸਾਹਿਬ ਦੇ ਸਰੀਰ ਦਾ ਵਿਹਾਤ ਨਹੀਂ ਕਰਨਾ ਜਿਹਨਾਂ ਦੇ ਸਿਲ ਖੁੱਲੇ ਰਹੇ ਉਹਨਾਂ ਨੂੰ ਉਸ ਰੀਤੇ ਨਾਲ ਮਹਾਰਾਜ ਸਾਹਿਬ ਦੀ ਦਾ ਸਤਕਾਰ ਕਰ ਦੇਣਾ ਜੋ ਜਨ ਨੂੰ ਬਧੂ ਸੀ ਤੇ ਸਿਉਣੀ ਸਿਖਾਣੀ ਉਹ ਫੁੱਲਾਂ ਦੇ ਕੋਕਰੇ ਲੈ ਆਏ ਮਹਾਰਾਜ ਸਾਹਿਬ ਜਿਥੇ ਚਾਹਵੇਂ ਉਹ ਵੇਖ ਮਾਰੇ ਤੇ ਉਹਦੇ ਰਾਹੇ ਵਾਲੇ ਰੱਖ ਦਿੱਤੇ ਕਿ ਜਿਹੜੇ ਇੱਥੇ ਉੱਤੇ ਅਰਵਾਜ਼ ਕੀਤੀ ਸੁਖ ਨੇ ਅਰਵਾਜ਼ ਕਰਦੇ ਫੁੱਲ ਉਸੇ ਪ੍ਰਕਾਰ ਜਿੰਨੇ ਸੀ ਸਾਰੇ ਪੰਜਾਬਾਇੀ ਨਾ ਹਿੰਦੂਆਂ ਦੇ ਨਾ ਮੁਸਲਮਾਨਾਂ ਦੇ ਉਹ ਫੁੱਲ ਉਹ ਖਿੜੇ ਰਹੇ ਕਾਈ ਮੰਨੀ ਸੀ ਸਾਹਿਬ ਨੇ ਇਹ ਲਿਖਿਆ ਸਭ ਖਿੜੇ ਰਹੇ ਉਹ ਕਾਵਰਾ ਚਾਕੇ ਮਾਰੇ ਉਹਦੇ ਵਰਸੇ ਕਰਨ ਲੱਗੇ ਕਈ ਨਹੀਂ ਆਈ ਦੇਵੀਏ ਲੋਕਾਂ ਨੂੰ ਕਿ ਉਹ ਮਹਾਰਾਜ ਸਾਹਿਬ ਸੱਚਖੰਨੀ ਕਰੇਗੇ ਫਿਰ ਉਸ ਜਿਹੜੇ ਸਾਰਿਆਂ ਨੂੰ ਕਹੇ ਕੋ ਲੋ ਭਾਈ ਗੁਰੂ ਸਾਹਿਬ ਨਾਲ ਆਪ ਹੀ ਝਗੜਾ ਨਹੀਂ ਹੋ ਰਿਹਾ ਇਹ ਮਹਾਰਾਜ ਦਾ ਮਤਵਾ ਹੈ ਨਾ ਹਿੰਦੂਆਂ ਦੇ ਅਨੁਸਾਰ ਹੈ ਨਾ ਮੁਸਲਮਾਨਾਂ ਦੇ ਅਨੁਸਾਰ ਇਹ ਸਾਰਾ ਹੀ ਝਗੜਾ ਮੇਰਦਾ ਗੁਰੂ ਸਾਹਿਬ ਸਾਰੇ ਨੂੰ ਸਮਝਿਆ ਕਾਹਦਾ ਗੁਰੂ ਸਾਹਿਬ ਦਾ ਉਕਲਾ ਅੱਧਾ ਮੁਸਲਮਾਨਾਂ ਨੇ ਲਈਆ ਅੱਧਾ ਹਿੰਦੂਆਂ ਨੂੰ ਦੇ ਦਿੱਤਾ ਹਿੰਦੂਆਂ ਨੂੰ ਪਿਆਰ ਕਰੂਗਾ ਮੁਸਲਮਾਨਾਂ ਨੂੰ ਜਾ ਕੇ ਇਸ ਪ੍ਰਕਾਰ ਦੇ ਦੇ ਲੋਕਾਂ ਦੇ ਜਾਂਗਰ ਮਾਲ ਦੀ ਬਣੀ ਹੋਈ ਸੀ ਉਹਨਾਂ ਦਸਰਾਹਤ ਕਿ ਉਹ ਸਾਰਾ ਝਗੜਾ ਮਿੱਗ ਗਿਆ ਕਿਉਂ ਐਸੇ ਸਤਿਗੁਰੂ ਜਿਹਦੇ ਸਾਰੇ ਖਾਲੀਆਂ ਨੇ ਇਹਨਾਂ ਵਿਚਾਰਿਆਂ ਦੇ ਸੰਜੋਹ ਹਣੇ hindu ਵੀ ਗੁਰਸਾਹਿਬ ਨੂੰ ਮੇਰ ਕਰਦੇ ਹਨ muslimਾਂ ਵੀ ਮੇਰ ਕਰਦੇ ਹੈ ਇਹ ਜੋ ਜਹਰਦੀ ਜੰਗੂਰ ਬਾਬਾ ਸਰਗੋਣ ਨਾਨਕ ਦੇ ਜੀ ਉਹ ਦੁਨੀਆ ਦੇ ਆਧਾਰ ਕਰਨ ਆਪੇ ਜਿਨ੍ਹਾਂ ਨੇ ਵਿਚਾਰ ਧਾਰ ਕੇ ਸਾਰੀ ਦੁਨੀਆ ਨੂੰ ਸਿੱਖੀ ਆਪਣੀ ਦਿੱਤੀ ਹੈ ਉਹਨਾਂ ਸਰਗੰਗਿਆ ਜੇਤੀ ਜੋ ਸਮੂਹ ਦਾ ਗੁਰਪੁਰਵ ਸਾਹਿਬ ਜੀ ਕਾਹ ਕਾਸ਼ਰਤ 10 ਮਿੰਟ ਹੋ 15 ਮਿੰਟ ਹੋ ਗਏ ਉਹਨਾਂ ਅੱਜ ਜਿਕੇ ਸਾਰੇ ਕਿ ਸ਼ਬਦ ਵੀ ਵਿਚਾਰ ਵੀ ਕਰ ਮਨਾ ਰਹੀਆਂ ਜੀ ਨਾ ਜੇਤੀ ਜੋ ਸਮੂਹ ਦਾ ਗੁਰਪੁਰਵ ਇਹ ਸੰਗੀ ਅੱਜ ਕਹਿੰਦੇ ਕੀਤੇ ਜੀ ਅੰਕਾਰ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਾਪੇ ਆਦਿ ਸਚੁ ਜੁਗਾਦਿ ਸਚੁ ਹੈ ਤੀ ਸਚੁ ਨਾਨਕ ਹੋਸੀ ਭੀ ਸਚੁ ਸਰਬ ਸੰਗੈ ਇਹ ਮੰਤਰ ਦੇ ਅਰਥ ਹੋ ਜੁਕਤੇ ਹਨ ਉਹ ਜੇਹਰ ਸੋਚੇ ਕਰਦੇ ਕਿ ਕੋ ਰਾਤ ਨੂੰ ਪਰਮੇਸ਼ੁਰ ਹੈ ਉਹ ਰਾਤ ਨੂੰ ਜੁਣੇ ਉਸ ਕਾਲ ਸਾਰੇ ਕਰਕੇ ਸਾਰੇ ਦਾ ਪ੍ਰਕਾਸ਼ ਹੋਣੇ ਤੇ ਸਤਿ ਕ੍ਰਿ ਹੋਣੇ ਤੇ ਇਥੇ ਜੁਣੇ ਸਾਰੇ ਜਗ ਦਾ ਕਰਤਾ ਹੋਣੇ ਤੇ ਕਰਤਾ ਰਹਿਤ ਹੋਵੇ ਹੋਣੇ ਤੇ ਇਹਨਾਂ ਨੂੰ ਕਿੰਨੀ ਅਧੀਨ ਆਇਆਂ ਨਾ ਹੋਣੇ ਕਿ ਅਜੰਨਾ ਨੂੰ ਸਭ ਸੁਦੇ ਪ੍ਰਕਾਸ਼ ਹੋਣੇ ਕਿ ਕੋਈ ਪ੍ਰਕਾਸ਼ ਕਿਹਨਾਂ ਗ੍ਰੀਤਨ ਹੋਣੇ ਕਿ ਕਿਹਨੂੰ ਕਿਹਨਾਂ ਪ੍ਰਸਾਦ ਮੰਦਰ ਹੋਣੇ ਕਿ ਜੰਮਨ ਜੀ ਨੂੰ ਜਪਨੀ ਯੋਗ ਹੋਣੇ ਕਰਕੇ ਦਾ ਬਾਣੀ ਦਾ ਨਾਮ ਕਰਕੇ ਮਾਰਾ ਸਾਈ ਕਾਮ ਕਰਦੇ ਹੁਣੇ ਗਿਰੀਂਦਰ ਸਾਹਿਬ ਪੁੱਛਿਆ ਮੈਂ ਸਰਦਾਰ ਜੀ ਜਿਦ ਕਰਦਾ ਗਾ ਕੇ ਮਨ ਨੂੰ ਕਹੇ ਗੁਰੂੰਦੇ ਸਾਹਿਬ ਜਿਹਾ ਦਾ ਵਸੂਤਾ ਆਦਿ ਸੱਚ ਸਾਰਾ ਜਨ ਜਦ ਤੱਕ ਅਜੇ ਰੁਕਿਆ ਨਹੀਂ ਸੀ ਆਜ ਬਤੀ ਇਹ ਸਤਿ ਸ੍ਰੀ ਕ੍ਰਿਪਾ ਵਾਲਾ ਸਤਿ ਕ੍ਰਿਪਤ ਸੀ ਜਗਾਤ ਸੱਚ ਤੂੰ ਜਗੈ ਬਣਾਉਣਾ ਕੀ ਸੀ ਸਭ ਦੇ ਉਹਨਾਂ ਦੇ ਆਤਮਾ ਦੀ ਸਤਿ ਗ੍ਰੀਤ ਹੈ ਮੈਂ ਤੀ ਸੱਚ ਜਦੋਂ ਵਰਤਮਾਨ ਸਮਾਂ ਕਲ ਵੀਰਾ ਜਨਮੇ ਹੋਏ ਇਸ ਵਿੱਚ ਸਾਡਾ ਸ੍ਰੂਪ ਸਤਿ ਗ੍ਰੀਤ ਹੋ ਹੈ ਨਾਨਕ ਹੋਸੀ ਤੀ ਸੱਚ ਜਿਵੇਂ ਬਹਿ ਜੋ ਹੈ ਕਲ ਜੀ ਕਹਿੰਦੇ ਨੇ ਜਦੋਂ ਉਹ ਗਿਆ ਆਦਿਕ ਰੂਪ ਵਿੱਚ ਵਰਤਮਾਨ ਕਾਲਾਰੇ ਬੋਲੇ ਜਾਣਗੇ ਉਸ ਵੇਲੇ ਇਹ ਸ੍ਰੂਪ ਸਤਿ ਗ੍ਰੀਤ ਹੋਣ ਦਾ ਨਾਸ ਹੋ ਰਹਿਤ ਹੋਵੇਗਾ ਇਹ ਸੁਣਨ ਕਰਦੇ ਹੋ ਮੀਰ ਮੰਨੂ ਕੀ ਦਿਨ ਜਿਸ ਸਾਡੇ ਕੋਲ ਆ ਕੇ ਪਰਖੀ ਦਿੱਤੇ ਹੋਣੇ ਕਿ ਮਹਾਰਾਜ ਤੁਸੀਂ ਨਾਮ ਵੀ ਨਹੀਂ ਲੈਂਦੇ ਹੋ ਦੁਨੀਆ ਦੇ ਅੰਦਰ ਦਾ ਤਰੀਕਾ ਹੈ ਸਭ ਕਹਿੰਦੇ ਨੇ ਸਰੀਰ ਵੀ ਪਵਿੱਤਰ ਦਾ ਹੋਣੀ ਚਾਹੀਦੀ ਹੈ ਸਰੀਰ ਨੂੰ ਸਾਫ਼ ਕਰਕੇ ਰੱਖੇ ਤੇ ਫਿਰ ਪਵਿੱਤਰ ਹੁੰਦਾ ਹੈ ਤਾਂ ਗੁਰੂ ਮਹਾਰਾਜ ਆਖਦੇ ਨੇ ਕਿ ਸਰੀਰ ਵੀ ਪਵਿੱਤਰ ਦਾ ਨਹੀਂ ਕਹਿੰਦੇ ਹੋ ਕੋਈ ਸੋਚਾ ਸੂਚ ਨਾ ਹੋਈ ਵਈ ਇਹ ਨਹੀ ਸੋਚਾ ਸੋਚ ਨਾ ਹੋਈ ਸੋਚਾ ਨਾ ਸ਼ਰੀਰ ਨੂੰ ਸੋਚ ਪ੍ਰਕਿਰ ਕਰਨੇ ਕਰਕੇ ਸੋਚ ਸ਼ਰੀਰ ਦੀ ਪ੍ਰਕਿਰ ਦਾ ਹੀ ਪਹਿਲਾ ਜੇ ਸੋਚੀ ਲੱਖ ਵਾਰ ਸੋਚ ਪ੍ਰਕਿਰ ਕਰੀ ਜਾਈਏ ਲੱਖਾਂ ਵਾਰੀ ਸ਼ਰੀਰ ਨੂੰ ਕੋਈ ਵੀ ਸ਼ੀਗ ਬੁਗਤ ਨਹੀਂ ਲੱਗ ਜਿਹੜੀ ਕਿ ਮੇਰੇ ਭਰੀ ਹੋਈ ਹੈ ਅੱਖਾਂ ਵਿੱਚ ਜੱਗ ਹੈ ਮਾਸਾਂ ਵਿੱਚ ਮਾਇ ਹੈ ਕੰਨਾਂ ਵਿੱਚ ਮਾਇ ਹੈ ਸਾਰੇ ਸਰੀਰ ਨੂੰ ਰੋਕੂ ਕਿਵੇਂ ਹੈ ਇਸ ਪ੍ਰਕਾਰ ਕੋਈਤਰ ਕਰੇ ਸਰੀਰ ਹੀ ਨਹੀਂ ਪਹਿਲਾਂ ਕੋਈਤ ਹੁੰਦਾ ਸਰੀਰ ਹੀ ਗਲੀਟ ਰਹਿੰਦਾ ਹੈ ਜਿਵੇਂ ਜਿਹੜੇ ਕੋ ਗੁਰੂ ਦੇਨ ਸਿੰਘ ਆਏਗੇ ਨੇ ਅਰਥਨਾਏ ਹਨ ਉਹਦੇ ਸੁਖਣ ਸੁਖਮਾਰਾ ਹੋ ਜਾਵੇ ਤੇ ਆਪੇ ਆਲੀਤ ਸੁਖ ਕਰਨ ਹੋਇਆ ਕੀ ਇਸ ਤੀਸਰੀ ਕਾ ਵਿਗਿਆਨ ਹੈ ਇਸ ਪ੍ਰਕਾਸ਼ਾਂ ਨੂੰ ਕਹਿੰਦੇ ਕਿ ਭਾਈ ਸੋ ਜੀਵਨਾਰਥੀ ਉਹ ਖੂਰੇ ਤੇ ਜਾ ਕੇ ਸ੍ਰੋਣ ਪਾਣ ਕਰਨ ਲੱਗਾ ਇੱਕ ਦਿਨ ਆ ਵੀ ਸਵਾ ਜੇ ਹੱਥ ਮਾਉਣ ਨੂੰ ਇਸ ਕਰਮ ਕਾਂਧੀ ਬ੍ਰਹਮ ਰੂਹੀਏ ਕਹਿਣ ਲੱਗਾ ਵੀ ਇਹ ਤਾਂ ਜੀਵਨਾਰਥੀ ਚੁੱਕੇ ਨਹੀਂ ਹੋਈਦਾ ਕਹਿੰਦੇ ਕਿ ਮੈਨੂੰ ਦੇਖੇ ਚੁੱਕੇ ਕਿਵੇਂ ਹੋਈਦਾ ਕਹਿੰ ਲੱਗਾ ਕਈ ਸਵਾਣਤ ਮਹਾਰਾਜ ਆਏ ਖੇਤੋਂ ਮਿੱਟੀ ਲੈ ਕੇ ਆਏ ਖੇਤੋਂ ਨੂੰ ਦੇਖਾ ਉਹ ਮਿੱਟੀ ਸਵਾਣਾਂ ਦੇ ਬ੍ਰਹਮਣ ਜੀ ਆਏ ਤੇ ਕਹਿਣ ਲੱਗੇ ਕਿ ਹਾਜ਼ਰ ਹੋ ਗਿਆ ਜਿਸ ਵੇਲੇ ਮੈਂ ਕੋ ਆ ਗਿਆ ਕਹਿੰਦਾ ਲੱਗਿਆ ਜੀ ਹੁਣ ਕੀ ਆ ਗਿਆ ਕਹਿੰਦੇ ਪਾਣੀ ਪਾਈ ਚਲ ਕੋਈ ਨੰਦ ਹੀ ਚੱਲ ਕਹਾਂਗਾ ਮਿੱਟੀ ਨਾਲ ਹੱਥੋਂ ਪੈਰੀਂ ਦੇਣਾ ਮਜਵਾਇਆ ਜਿਸ ਵੇਲੇ ਮਜਵਾਇਆ ਫਿਰ ਬ੍ਰਾਹਮਣ ਨੇ ਪਾਣੀ ਦੇ ਦੋ ਦੇਤੇ ਪਾ ਦਿੱਤਾ ਕਹਿੰਦਾ ਜੀ ਹੁਣ ਨਾ ਸਿੱਖਿਆ ਹੋ ਗਿਆ ਤਨੀ ਕੋ ਹੋਂ ਹੋਂ ਹੋ ਗਿਆ ਲੈ ਕੇ ਜੱਤੂ ਮੱਛਲੇ ਨੇ ਕੋਈ ਮਾਰੀ ਤਾਂ ਮੰਨ ਕਹਿੰਦਾ ਉਹ ਹੋ ਮੈਨੂੰ ਸਿੱਖਿਆ ਕਰਦਾ ਇੰਨਾ ਇੰਨਾ ਪਾਣੀ ਨਾਲ ਮਿੱਟੀ ਨਾਲ ਮਜਵਾਇਆ ਅਜੇ ਵੀ ਸਿੱਖਿਆ ਹੋ ਗਿਆ ਤੂੰ ਇਸ ਪ੍ਰਕਾਰ ਜੀ ਉਹ ਇਸੇ ਪ੍ਰਕਾਰ ਕਹਿੰਦੇ ਜੇ ਸੋਚਿਆ ਸੋਚਣਾ ਹੋ ਗਈ ਜੇ ਕਰਕੇ ਸੋਚ ਨਿਕਲਦਾ ਕਰਨਾ ਚਾਹੀਦਾ ਇਹ ਸ਼ਰੀਰ ਦੀ ਕਮਿਟਰ ਕਾਇੀ ਨਹੀਂ ਹੁੰਦੀ ਹੈ ਜੇ ਸੋਚੀ ਲਖਵਾ ਜੇ ਮੰਗਾਂ ਵਾਲੀ ਸੋਚ ਸ਼ਰੀਰ ਨਹੀਂ ਪੋਕਰ ਗਈ ਇਹ ਸੀ ਵੀ ਜੋਤ ਨੂੰ ਮੁੱਕਦੀ ਨਹੀਂ ਰਹੇ ਚੁੱਪ ਚੁਪ ਨਾ ਹੋਵਈ ਹੋਰ ਬੰਦ ਜੇ ਚੁੱਪ ਕਰਨੇ ਕਰਕੇ ਚੁੱਪ ਨਹੀਂ ਹੋ ਸਕਦੀ ਕਿਸੇ ਪ੍ਰਕਾਰ ਜੇ ਲਾਏ ਰਹਾ ਨਿਵਤਾ ਜੇ ਤੀਨ ਦਾ ਲੋਦੀ ਨਾ ਹੀ ਰੱਖਣੋ ਤੇ ਮੈਂ ਬੋਲਣਾ ਨਹੀਂ ਮੂੰਹ ਤਾਂ ਹਲਕੇ ਮੈਂ ਬੋਲ ਗਈ ਉਹ ਜਿਹੜੀ ਕਈ ਵਾਰੀ ਸਿੱਖੀ ਮੋਨੀ ਨੂੰ ਜੇ ਕੁਝ ਲਾਵੇ ਉਹ ਬੋਲ ਪੈਂਦੇ ਤੇ ਜੇ ਕੋਈ ਪ੍ਰਕਾਰ ਕਮੋਨੀ ਗੁਰੂ ਦੇ ਵੀ ਸੀ ਕਾਹਦੇ ਪਾਸ ਆਇਆ ਉਹ ਬੋਲਿਆ ਨਾ ਕਰੇ ਕਰੀ ਦੇਵ ਸਿੰਘ ਸਾਹਿਬ ਜੀ ਮਹਾਰਾਜ ਦੇ ਆ ਰਹੇ ਸਨ ਉਹੋ ਸਿੱਖਣ ਕੇ ਮਹਾਰਾਜ ਚੁੱਕੀ ਨਹੀਂ ਜੀ ਨਾ ਹੀ ਬੋਲੇ ਮਹਾਰਾਜ ਨੂੰ ਖੰਨੀ ਪਈਏ ਬਸ ਸੁਣਾਉਣੇ ਤਰੀਕਾ ਉਹ ਮੋਨੀ ਮਾਰੇ ਸਾਹਦੇ ਪਾਸ ਆ ਕੇ ਸਿਰ ਕੋਈ ਲਿਖ ਲੂ ਕੇ ਗਿਆ ਕੇ ਕੋਈ ਗੱਲਬਾਤ ਨਾ ਕਰੇ ਮੇਰੇ ਇੱਕ ਸਿੱਖ ਨੂੰ ਕਹਿਣ ਲੱਗੇ ਮੈਂ ਸਿੱਖਾ ਜੋ ਤੇਰੇ ਘਰ ਵਿੱਚ ਚੰਗੇ ਪਦਾਰਥ ਹੈ ਉਹ ਹੀ ਲਿਆ ਕੇ ਸਿੱਖਾ ਉਹ ਪਿਆਰ ਕਰੀ ਬਸਰ ਵੀ ਬਰੀ ਲੈਂਦਾ ਚੰਗੀ ਤਰ੍ਹਾਂ ਸਿੱਖਾ ਕੇ ਸਾਡੇ ਘਰ ਲਿਆਏ ਮੋਨੀ ਇਹ ਮੁਹੱਬਤ ਸਿੱਖ ਕਹਿੰਦਾ ਉਹ ਸਮਝਾਤਾ ਵੀ ਚੰਗੀ ਤਰ੍ਹਾਂ ਉਹ ਜਿਹੜੀ ਖਾਤੇ ਕਰਨੀ ਹੈ ਕਰਦੀ ਤਰੀਕੇ ਨਾਲ ਸਤਿਗੁਰੂ ਸਾਚੇ ਵਿੱਚ ਲਿਜਾਣਿਆ ਆਪੇ ਕਹਿ ਤਾ ਇਹ ਘਰ ਦੇ ਵਿੱਚ ਇਹ ਸ੍ਰੀਖੋਲਿਆਂ ਦਾ ਮਿੱਠਾ ਪ੍ਰਖਾਦਾ ਸੀ ਇਹ ਰੋਟੀ ਦਾ ਨਸੀਲੀ ਕੁਟੋਰੀ ਭਰ ਕੇ ਦੇਤੀ ਇਹ ਬੁਣਾ ਲਾ ਸਿੱਖਾਂ ਹੋ ਗਈਆਂ ਮੋਨੀ ਦੀਆਂ ਉਹ ਰੋਟੀ ਦਾ ਟੁਕੜੀ ਪੁਲਾ ਕੇ ਮਾਰੀ ਲੱਸੀ ਗੋਲ ਦਿੱਤੀ ਕੋਈ ਬੁਖੇੜਾ ਭਰਿਆ ਮਹਾਰਾਜ ਦੇ ਪਾਸ ਆ ਗਿਆ ਕੰਜੀ ਸਾਹਿਬ ਹੱਥ ਕੇ ਕਹਿੰਦੇ ਲਓ ਸੁਣਾਈਏ ਜਦੋਂ ਉਹ ਜੀ ਮੋਨ ਦਾ ਮੋਨ ਖੋਲ ਗਏ ਮੋਨੀ ਦਾ ਕੋਲ ਮਾਰੋ ਖੋਲੋ ਉਹ ਸਿੱਖ ਆ ਗਿਆ ਬਾਸਤੋਂ ਕਿ ਸਿੱਖਾਂ ਕਹਿੰਦੇ ਜਿਹਨੇ ਆਗਿਆ ਕੀਤੀ ਸੀ ਉਹਨੇ ਸੇਵਾ ਕੀਤੀ ਸੀ ਕਿ ਨਹੀਂ ਕਹਿੰਦੇ ਹਰੇ ਮਹਾਰਾਜ ਜਿਨੇ ਆਗਦੀ ਆ ਗਿਆ ਸੀ ਉਨੀ ਨੇ ਸ਼ੁਰੂਆਤ ਕੀਤੀ ਉਹ ਜਿਹੜੇ ਮੋਨੀ ਸੀ ਮੋਰਕੂਲ ਕਹਿੰਦਾ ਮਹਾਰਾਜ ਤਾਂ ਗੁਰੂ ਕੋ ਮਾਰੇ ਨੇ ਮੈਨੂੰ ਕੁਝ ਨਹੀਂ ਦਿੱਤਾ ਛੋਲਿਆਂ ਦੀ ਰੋਟੀ ਮੱਛੀ ਲੱਗਦੀ ਨਾ ਦੁੱਧ ਪਾ ਚਿੰਗਣਾ ਦੇਖਿਆ ਜਿੰਕੇ ਮਾਰੇ ਖਾ ਖੜਖੜਾ ਕੇ ਅੱਜ ਤੱਕ ਵੀ ਦੇਖ ਲਓ ਮੋਨੀ ਦਾ ਮਾਰਕੂਲ ਜੀ ਇਸੇ ਦਰਬਾਰ ਦੇ ਚੰਦ ਕਰੀਏ ਆਗ੍ਰੀ ਦੇ ਚੰਦ ਹੋ ਰਿਹਾ ਨਹੀਂ ਜਾਂਦਾ ਕੋਈ ਐਸਾ ਸੁਹਾਵਾ ਆ ਜੰਦਾ ਜਿਸੇ ਮੋਨੂ ਦਾ ਖੁੱਲ ਹੀ ਜਾਂਦਾ ਹੈ ਵੇ ਲਾਏ ਰਹਾ ਨਿਵਤਾ ਅਰਣ ਦੇ ਖੇਮ ਘੜਾਵਾ ਤੇ ਲੋਦੀ ਮਾਈ ਰੱਖੇ ਜੇ ਵੀ ਮੋਨ ਖਿ ਲ ਜਾਂਦਾ ਤੇ ਚੱਟ ਮੋਨ ਕਹਿੰਦੇ ਠੀਕ ਹੀ ਹੈ ਸੁੱਖਿਆ ਸੁਖ ਨਾ ਕੇ ਵੀ ਦੇਦਿਏ ਨੂੰ ਉਹ ਬਿਖਿਆਲੀ ਕੋਤਪੂਰੀ ਨੀਂ ਮਾਲ ਕੋ ਆਪਣੇ ਇਸੇ ਪ੍ਰਕਾਰ ਜਿੱਥੇ ਆਂਦੀ ਹਸਕਾ ਦੀ ਏਥੇ ਛਾੜੇ ਉਸ ਦੀ ਪਟਿਆਰੇ ਵਿੱਚ ਦੋ ਦੋ ਸੌ ਰੁਪਏ ਖੜ ਜਾਂਦਾ ਲੋਕਾਂਾਂ ਕਹਿੰਦੇ ਡਾਕਟਰ ਜਰਵਾ ਕਰਦੇ ਉਹਦੇ ਨਾਲ ਇਸੇ ਪ੍ਰਕਾਰ ਕੁਖਰੀ ਵੀ ਉਹਨਾਂ ਪੂਰੀਆਂ ਦੇ ਧਾਰ ਬੰਨ੍ਹ ਕੇ ਉਹਨਾਂ ਦੇ ਪੈਸੇ ਦੇ ਲਈਏ ਦੇ ਲਈਏ ਧੁੱਕੀ ਰਹਿੰਦੇ ਕੱਟ ਨੋਗ ਦੀ ਬਿਮਾਰੀ ਵੀ ਨਿੰਦਰੀ ਹੋਈ ਹੈ ਜਿਵੇਂ ਇਸੇ ਵਿਕਾਰ ਧੁੱਕੀ ਜਿਹੜੇ ਕੋਲ ਖਾਏ ਉਹਨਾਂ ਨੂੰ ਕਿਨੇ ਪੁਰਗੋਲੇ ਭਾਰਤ-ਵਾਰਸਾ ਦਾ ਨ ਕੋ ਦੇਰੀਏ ਬਿਸ਼ਨਪੁਰੀ ਦੇ ਗੋਮਪੁਰੀ ਦੇ ਫਿਰ ਵੀ ਭੁੱਖੇ ਨਹੀਂ ਕੁੱਖ ਨਹੀਂ ਉੱਰਦੀ ਹੈ ਸਹਸ ਵਿਚਾਰ ਕਰਨੇ ਕਰਕੇ ਪਰਮਾਤਮਾ ਵੀ ਵਿਚਾਰ ਨਹੀਂ ਕਿਸੇ ਪ੍ਰਕਾਰ ਹੋ ਸਕਦੀ ਸਿੱਧੋ ਅਨੇ ਜੇ ਸੋਚੀ ਲੱਖ ਵਾਰੀ ਵਿਚਾਰ ਸੋਚੀ ਆਈਏ ਕਰਦੇ ਰਹੀਏ ਪਰਮੇਸ਼ਰ ਦੀ ਵਿਚਾਰ ਨਹੀਂ ਦੀ ਗੁਣੀਆਂ ਕੀ ਆਗਮੀ ਪਿਆਰ ਹੁੰਦਾ ਹੈ ਚੁੱਪ ਚੁੱਪ ਨਾ ਹੋਵੇਈ ਤਾਰੂ ਮਨ ਧਾਰਨੀ ਕਰਕੇ ਚੁੱਪ ਕਰਨੇ ਕਰਕੇ ਮਨ ਦੇ ਸਿਕਲਤਾਂ ਵਿਕਲਪਾਂ ਦੀ ਚੁੱਪ ਨਹੀਂ ਹੁੰਦੀ ਮਨ ਹੀ ਹੁੰਦੇ ਹਨ ਦੇ ਹੈ ਖਿੰਦੀ ਨਹੀਂ ਹੁੰਦੀ ਦੇਖਦਾਰ ਹੁੰਦੀ ਹੈ ਉਹ ਜਪਨੀ ਦੇਖਦਾਰ ਬਣਾ ਕੇ ਲਾਂਚਦੇ ਜੇ ਵੀ ਮੰਨਦੇ ਸੰਕਲਪਾਂ ਦੀ ਟਿਕ ਨਹੀਂ ਹੋ ਸਕਦੀ ਮਨ ਫੁਰਮੇ ਫਰਾਂਦਾ ਹੀ ਦੇ ਸੁੱਖਿਆ ਧਾਰ ਗੁਰੂ ਦੀ ਦੇ ਕੇ ਦੇ ਦਈਏ ਉਹਨਾਂ ਦੀ ਟਿਕ ਨਹੀਂ ਕੋਈ ਜੇ ਕੋਈ ਆਦਮੀ ਸਾਧ ਸੰਗਤ ਦੀ ਪ੍ਰਿਥਨਾ ਸੀ ਉਸੇ ਗੁਰੂ ਦੀ ਉਪਾਸਨਾ ਕੀਤੀ ਜਿੰਨੀ ਪ੍ਰਸੰਗ ਹੋ ਕੇ ਤੇ ਮੈਂ ਭਾਈ ਆ ਨੂੰ ਜਦਾਂ ਹੋ ਜੀ। ਬੱਤੀ ਲੈ ਕੇ ਜੇ ਨਾ ਰੱਗੇ ਤੂੰ ਤੇ ਦੱਖਣ ਵੱਲ ਨੂੰ ਤੁਰ ਜਾਈਂ। ਤੀਜੀ ਬੱਤੀ ਲੈ ਕੇ ਪੱਛਮ ਵੱਲ ਨੂੰ ਤੁਰ ਜਾਈਂ। ਚੌਥੀ ਬੱਤੀ ਨਾ ਜਗਾਈਂ। ਤੇ ਫੇਰ ਤੂੰ ਫਸ ਜਾਵੇਂਗਾ ਜੋ ਗੁਨਾਹ ਕੀ। ਇਹ ਗੱਲ ਸੁਣ ਕੇ ਕਹਿੰਦੇ ਚਲ ਆਈਂ। ਉਹ ਵੀ ਬੱਤੀ ਲਾ ਕੇ ਜਦੋਂ ਵਿਆਹ ਤੇ ਪੈਸਿਆਂ ਦੇ ਭਾਂੜੀ ਭਾਂੜ ਦੇਖੇ ਇਹ ਸੋਚਿਆ ਥੇਰ ਕਹਿੰਗੇ ਕਿ ਪੈਸਾਨੀ ਕਿੱਥੇ ਆ ਉਸ ਦੇ ਨਿਸ਼ਾਨ ਸਿੰਘ ਜੀ ਰੁਪਏ ਦੇਖੇ ਲਿਆ ਤੇ ਤੀਜੇ ਪਾਸੇ ਵਿਆਹ ਤੇ ਮੋਹਰਾਂ ਦੇਖੀਆਂ ਰੀ ਉਸ ਤੇ ਹੈਰਾਨ ਹੋ ਗਏ ਕਹਿੰਦੇ ਮੋਹਰਾਂ ਬੜੀਆਂ ਕਹਿੰਦੇ ਚੌਥੀ ਬੱਤੀ ਜਿਹੜੀ ਭਾਵੇਂ ਸ਼ਿਵਾਨ ਮੈਨੂੰ ਰੋਕਿਆ ਸੀ ਜੇ ਕੀ ਮਤੀ ਦੀ ਆ ਕੇ ਉਹ ਵਿਆਹ ਤੇ ਹੀਰੇ ਵਾਂਗ ਰਾਤ ਦੇਖੇ ਦੇਖਦਾ-ਦੇਖਦਾ ਅੰਦਰ ਗਿਆ ਕੋਈ ਇੱਕ ਮਕਾਨ ਹੈ ਕੋਨੇ ਦਾ ਤੱਕਦੇ ਲੱਗੇ ਹੋਏ ਆ ਉਹਨੂੰ ਛੱਕਾ ਦੇਤਾ ਤੇ ਖੁੱਲ ਗਿਆ ਉਹ ਹਰਦਾਰਾਂ ਜਦ ਦੇਖਿਆ ਤੇ ਆਦਮੀ ਸੀ ਅੰਦਰ ਉਹ ਕਹਿੰਦਾ ਆਹ ਵੀ ਮੈਂ ਕੋਈ ਬਣਾਉਂਦਾ ਅਜੀਬ ਨੇ ਲੈ ਉਸ ਦੇ ਹੱਥੋਂ ਫਿਰ ਗਏ ਕਹਿੰਦੇ ਕਹਿ ਕੀ ਕਰਨਾ ਕਿ ਮੈਂ ਕੋਈ ਦੇਖਾਂਗਾ ਤਾਂ ਉਹ ਸੁਪੀਰ ਉਸ ਹੱਥੋਂ ਦੇ ਤਾਂ ਨਿਕਲ ਕੇ ਲਿਆ ਕਹਿੰਦਾ ਮੈਨੂੰ ਕੌਣ ਕਹੇ ਤੇਰੇ ਵਰਗਾ ਕੋ ਹੋ ਰਾਕੀ ਤੈਨੂੰ ਕਹੀ ਜੋ ਜਿਹੜੇ ਤੂੰ ਤਿਆਰ ਛੱਡ ਕੇ ਆਇਆ ਉਹ ਪਦਾਰਥ ਮੈਂ ਸਾਹਾਂਗਾ ਇਸ ਪ੍ਰਕਾਰ ਸਾਹਿਬ ਸੰਗੇ ਦੀ ਦੁੱਖਾਂ ਕੋਲ ਖਾਂਦੀ ਦੁੱਖੀ ਕੋਲ ਦੀ ਇਹ ਦੁਨੀਆਂ ਦੇ ਭਾਰ ਪਦਾਰਥ ਵੀ ਬੰਨ ਕੇ ਦੇ ਗਏ ਜੇ ਵੀ ਤੁੱਖੇ ਹੀ ਰਹਿੰਦੇ ਹਨ ਸਹ ਸਿਆਲਤਾ ਲਖ ਹੋਏ ਇਹੋ ਪ੍ਰਕਾਰ ਸਰਮਹੋਦੇ ਹਨ ਸਹ ਹੋਏ ਹਜ਼ਾਰਾਂ ਪੁਸਤਕਾਂ ਦੀਆਂ ਇਸੇ ਸ਼ੇਣ ਤੋਂ ਅਰੀ ਜਾਣਦਾ ਹੋਵੇ ਨਾ ਇੱਕ ਲਾ ਚੱਲਣਾ ਨਾਲ ਕੋਈ ਪਰਮੇਸ਼ਰ ਦੇ ਬਾਣੀ ਨਾਲ ਕੋਈ ਕੰਢੀ ਨਹੀਂ ਹੈ ਜਿਹਨ ਹਲਾਤੀ ਬੜਾ ਚੰਨਾ ਸੀ ਉਹ ਆਦੇ ਵਰਗੇ ਤਲੂਤ ਘੱਲ ਲੈਂਦਾ ਸੀ ਜਦੋਂ ਕੰਦੇ ਮੌਤ ਦਾ ਸੁਣਾ ਆਇਆ ਉਹਨੇ ਆਦੇ ਵਰਗੀ ਸਤਨਾ ਚਾਹੀਦੀ ਤੇ ਧਰਮ ਰਾਜਾਂ ਨੂੰ ਮੌਤ ਨਹੀਂ ਭੁੱਜਿਆ ਮੌਤ ਜਦੋਂ ਆਈ ਸਿਆਣ ਨੂੰ ਸੱਚੀ ਹਲਾਤੀ ਕਿਹੜਾ ਹੈ ਗਾਵੀਆਂ ਘਰ ਤੋਂ ਜਿਵੇਂ ਉਹਦੇ ਵਰਗੇ ਅਕਾਰ ਉਹਦੇ ਵਰਗੇ ਰੂਪੇ ਦੇ ਵਰਗੇ ਜਿੰਨ ਚੱਕਰ ਸਾਹੂ ਨੇ ਬੋਲਿਆ ਆ। ਉਹ ਕੋ ਮੌਤਰੀ ਦਾ ਘਰ ਆਇਆ ਮੈਂ ਅਗਲਾ ਤੂੰ ਇਹ ਸਾਂ ਨਹੀਂ ਕਰੀਹੀ ਇਹ ਦੁਗਿਆ ਦਾ ਚੱਕਰ ਹੈ। ਉਹ ਨਹੀਂ ਜਿਸਾਨ ਬਣਾ ਘਰ ਤੇ ਹੈ। ਕੰਨ ਦਾ ਘਰ ਆਇਆ ਤੂੰ ਨੇ ਕਰੇ। ਉਹ ਵੀ ਨੂੰ ਸਲਾਉਂਦੀ ਜਾ ਇੱਕ ਪਾਸੇ। ਇੱਕ ਪਾਸੇ ਕਹਦੀ ਹੈ ਠੀਕ ਨਹੀਂ। ਇਸ ਨੂੰ ਮੌਜ ਨਹੀਂ ਕੀਤਾ ਸਲਾਵੀ ਇਹ ਕਰਨ ਕਿਉਂਣਾ ਹੈ। ਜੋਹਨ ਕਹਿੰਦੇ ਨਹੀਂ ਸਗਲੋ ਕੰਧੀਆਂ ਸਾਰੇ ਬਣਾਤੀ ਬਣਾਤੀ ਹੈ। ਕਿਰੇ ਤੇ ਜਾ ਕੇ ਕਹਿੰਦੇ ਕੰਮ ਦਿੰਗੇ ਠੀਕਾ ਮੱਕ ਨਹੀਂ ਠੀਕ ਬਣਾਇਆ। ਉੱਥੋਂ ਦਿੱਕੇ ਨਿਕਲ ਕੇ ਕਹਿ ਲਗਾ ਤੂੰ ਕੌਣ ਹੈ ਇਸ ਤਰੀਕੇ ਦੇ ਨਾਲ ਸਾਧ ਸੰਗਧੀ 11 ਪੁਸਤਕਾਂ ਨਹੀਂ ਸਾਰੇ ਜਾਣਦਾ ਹੋਵੇ। ਪਰ ਹੋਣੀ ਦੇ ਨਾਲਕਾਰ ਦੇ ਨਾਲ ਕੋਈ ਇੱਕ ਸਾਨ ਨਹੀਂ ਉਸ ਵੇਲੇ ਖੜੀ ਹੋ ਜਾਂਦੀਆਂ ਸਾਰੀਆਂ ਸਾਨ ਇਸੇ ਪ੍ਰਕਾਰ ਹਜੂਰ ਸੁਣੇ ਇਹ ਸਹ ਪ੍ਰਿਆਨ ਦਾ ਲਖ ਹੋਵੇ ਅਲਾਰਾ ਪੁੱਛਦਾ ਨਹੀਂ ਹੈ ਲੱਖਾਂ ਜਵਰ ਤਾਂ ਜਾਣਦਾ ਹੋਵੇ ਇਹ ਸਿੱਖ ਮਨ ਲੋਕ ਕਹਿੰਦੇ ਨਾ ਇਹ ਕੋਈ ਚੱਲਦਾ ਆਗਾ ਮੰਮੀ ਰੋਕ ਕਰਦਾ ਹੋਵੇ ਕਿ ਵਕਤ ਨੇ ਸਣਾ ਹੋਈ ਆਪਣੇ ਮਨ ਤੇ ਇਸੇ ਪ੍ਰਕਾਰ ਸੋਚ ਸੋਚ ਨਾ ਹੋਵਈ ਸੋਚ ਨਾ ਹੋਵੀ ਜਿਵੇਂ ਕੀ ਲਖ ਸੋਚ ਨਾ ਸਾਥ ਸੰਗੇ ਜੀ ਫਿਕਰ ਦਾ ਫਿਕਰ ਕਰਨੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਫਿਕਰ ਸੰਕਲਪ ਨਹੀਂ ਹੋ ਸਕਦਾ ਜੇ ਸੋਚੀ ਲੱਖ ਵਾਰ ਲੱਖ ਵਾਰੀ ਫਿਕਰ ਕਿਤਨੀ ਕਰਦੇ ਰਹੀਏ ਉਸ ਜਗਤੀਆਂ ਨਾਲ ਪਰਮੇਸ਼ਰ ਦੀ ਲੱਗਣ ਵਾਲੀ ਸੋਚ ਨਹੀਂ ਵਿਚਾਰ ਨਹੀਂ ਪ੍ਰਾਪਤ ਹੋ ਸਕਦੀ ਇਸੇ ਪ੍ਰਕਾਰ ਸੋਚਾ ਚਿੰਤਾ ਵੀ ਪਿਆਰੇ ਤਾਂ ਵਿਰਾਗ ਨਹੀਂ ਕੀ ਸੰਗਤ ਜੀ ਇਹਦੇ ਅੰਦਰ ਜਗਣੀ ਨਹੀਂ ਕਾਇਦਾ ਹੋ ਸਕਦੀ ਹੋਰਨਾਂ ਸੋਚੇ ਗਏ ਲੱਖਾਂ ਵਾਰੀ ਸੋਚੀ ਹੈ ਕੋਈ ਵੀ ਰਾਗ ਨਹੀਂ ਪੈਦਾ ਹੋ ਸਕਦਾ ਕਿਉਂਕਿ ਯੋਗ ਨੂੰ ਕਰਕੇ ਮਨਕ ਵਿਚਾਰ ਨਹੀਂ ਹੁੰਦਾ ਸਰੀਰ ਵੀ ਸੁਖੁਰਾ ਹੁੰਦਾ ਅਤੇ ਉਹ ਕਰਨੇ ਕਰਕੇ ਮਨਕ ਵਿਚਾਰ ਨਹੀਂ ਪ੍ਰਾਪਤ ਹੁੰਦੀ ਕਿਸੇ ਪ੍ਰਕਾਰ ਕਿੱਤਨੀ ਕਰਨੇ ਕਰਕੇ ਪਰਮੇਸ਼ਰ ਦੀ ਕਿੱਤਨੀ ਨਹੀਂ ਹੁੰਦੀ ਰਾਗ ਦੇ ਸੁਖਣੇ ਕਰਕੇ ਰਾਗ ਨਹੀਂ ਪੈਦਾ ਹੁੰਦਾ ਇਹ ਲਖਣ ਵਾਰੀ ਜੇ ਕਰੀ ਜਾਵੇ ਸੁੱਖ ਪੈ ਸੁੱਖ ਨਾ ਹੋਈ ਵਈ ਜਿ ਕਰਕੇ ਕਿਸੇ ਪ੍ਰਕਾਰ ਮੰਨ ਦੇ ਸੰਕਲਪਾਂ ਦੇ ਕਲਪਾਂ ਵਿੱਚ ਕੋਈ ਸ਼ਾਂਤੀ ਜੇ ਰਹਿਣੇ ਕਰਕੇ ਪਰਮੇਸ਼ਰ ਦੇ ਨਾਮੋਂ ਦੀ ਤੁਖੀ ਨਾਮ ਦੀ ਤੁਖੀ ਉਹ ਉੱਤਰ ਦੀ ਨਹੀਂ ਰਹਿੰਦੇ ਆ ਜੀ ਬਾਹਰ ਦੇ ਵਰਤਾਰ ਨੂੰ ਨਹੀਂ ਇੰਦਰੀਆਂ ਨੂੰ ਭਾਰਤਵਾਰਤਨ ਨੂੰ ਬੰਨ ਖੱਡੇ ਹੋਰ ਵੀ ਨਾਮ ਦੀ ਤੁਖੀ ਉੱਤਰ ਦੀ ਕਿਸ ਨਾਮ ਦੀ ਤੋੜ ਕੇ ਸਾਡੇ ਨਾਮ ਕੀ ਲਾਗਾ ਧੂਕ ਉੱਜੇ ਕਾਇ ਕलिए ਧੂਕ ਕੀ ਸੁਖ ਨਾਲ ਸਾਰੇ ਦੇਖਣਾ ਹੈ ਕੋ ਜਾਨੇ ਉਹ ਤੋਖੀ ਲੱਗਦੀ ਹੈ ਪੁਸਤਕਾਂ ਨਹੀਂ ਲੱਖੇ ਸੇਵਨ ਕਰੇ ਸੁਰਖ ਦੇ ਪਾਸੇ ਨੂੰ ਤਾਂ ਇੱਕ ਨਾ ਚੱਲੇ ਇਹ ਕੋਈ ਨਾ ਨਹੀਂ ਜਲਦੀ ਜਾਣੀ ਵੀ ਇਹ ਮਹਾਰਾਜ ਦਾ ਸਰਕਾਰਾ ਵਰਤਨਾ ਕੋਈ ਵਰਤ ਕੇ ਰਹਿੰਦਾ ਚਾਣ ਪਾ ਸਾਰੀਆਂ ਵਿੱਚ ਹੀ ਖੁੱਝ ਜਾਂਦੀਆਂ ਵੀ ਇਸੇ ਪ੍ਰਕਾਰ ਫੇਰ ਕੋ ਸੋਚੈ ਸੋਚ ਨਾ ਹੋਵੇਈ ਸਿੰਘ ਮੰਨੇ ਸਨ ਇੱਕ ਤਾਂ ਸ਼ਰੀਰ ਦੀ ਸੁੱਧੀ ਤੇ ਬਾਣੀ ਦੀ ਮੌਮ ਇਹ ਜੇ ਮਰਦੇ ਰੱਖਣੀ ਕਿਉਂ ਤਾਂ ਪੋਸਤਾ ਨਹੀਂ ਆਣ ਪਾ ਸਤਿਗੁਰੂ ਜੀ ਕਹਾਂ ਉਹ ਖੰਡਨ ਕਰ ਦਿੱਤਾ ਉਸ ਦਿਨ ਦਰਸ਼ਨ ਕੀਤਾ ਜਿਸ ਪਿਆਰਾ ਤੇ ਪ੍ਰਾਪਤੀ ਆਲੇ ਕਿਸ ਪ੍ਰਕਾਰ ਹੋਈ ਹੈ ਆਪ ਦੇਖੋ ਕੂੜਾ ਪਾਲ ਉਹ ਜੂੜ ਜਿਹੜੀ ਪਾਲ ਕੋਲੋਖਣੇ ਉਹ ਕਿਸ ਪ੍ਰਕਾਰ ਪੜਦਾ ਕਿਤੇ ਮਾਰਾ ਬੱਤਕੀ ਵੀ ਕਿਤੇ ਇਹ ਤੁਮਰੇ ਜਾਈ ਚੱਲਣ ਸੰਤ ਸਿੰਘ ਸਾਹਿਬ ਨੇ ਕਹਿੰਦੇ ਨਹੀਂ ਸਿੱਧੋ ਜਾਈ ਰਿਜਾਈ ਜੋ ਹੁਕਮ ਕਰਨ ਵਾਲਾ ਪ੍ਰਮੇਸ਼ਵਰ ਉਹਦੇ ਹੁਕਮੀ ਦੇ ਹੁਕਮ ਵਿੱਚ પ્રસન્ન ਹੋ ਕੇ ਚੱਲਣਾ ਹੋਇਆ ਸੰਨ੍ਹੇ ਦੇ ਹੁਕਮ ਦੇ ਅੰਦਰ ਹੀ ਮਾਰਾ ਸਾਡ ਰੱਖਿਆ ਹੋਇਆ ਹੈ ਸਾਰਿਆਂ ਦੇ ਮੱਥੇ ਦੇ ਨਾਮ ਲਿਖੜ ਕੇ ਕੋਈ ਕੀਤਾ ਹੁਕਮ ਪ੍ਰਮੇਸ਼ਵਰ ਪ੍ਰਕਾਰ ਦੇ ਹੁਕਮ ਨੂੰ ਵਿਧਿ ਕਰਕੇ ਇਹ ਇਹ ਸੱਚੀ ਪ੍ਰਾਪਤੀ ਹੁੰਦੀ ਹੈ ਇਹ ਤਰ੍ਹਾਂ ਦਾ ਜਦੋਂ ਸੰਕਰੇਣੇ ਕਰਕੇ ਸਰੀਰ ਦੀ ਕਲਨੇ ਤ੍ਰਿਸ਼ਣੇ ਦੀ ਜਿਹੜੀ ਹੰਗ ਦਾ ਤੇ ਚਿੰਤਾ ਉਹ ਖੁੱਲਦੀ ਹੈ ਇਸ ਸਾਹਿਬ ਜੀ ਇਹੀ ਸੋਚੀ ਜਾਏ ਵਿਚਾਰ ਕਰਦੇ ਹੀ ਇਹ ਕਿ ਸੋਚ ਕਦੇ ਵੀ ਵਿਚਾਰ ਨਹੀਂ ਕਰ ਹੋਵੇਗੀ ਇਹ ਸੋਚੀ ਲੱਖ ਵਾਰ ਕਹੇ ਲੱਖਾਂ ਵਾਲੀ ਹੀ ਸੋਚੇ ਰਹੀਏ ਕਹੇਗੀ ਕਿ ਕਹਿੰਦੇ ਪਰਮੇਸ਼ਰ ਦੇ ਲੱਖਾਂ ਵਾਲੀ ਸੋਚ ਨਹੀਂ ਪਾਈ ਕਿ ਜੀਵੂਗੀ ਸੋਚ ਵਿਚਾਰ ਨਹੀਂ ਜੀਵੂਗੇ ਇਹ ਸੋਚਿਆ ਸੋਚਣਾ ਹੋ ਗਈ ਪਰਮੇਸ਼ਰ ਦੀ ਲੱਖਾਂ ਵਾਲੀ ਸੋਚ ਵਿਚਾਰ ਦੇ ਵਿਚਾਰ ਕਰਕੇ ਫਿਰ ਸੋਚ ਨਾ ਹੋ ਕੋਈ ਵਿਚਾਰ ਨਹੀਂ ਪ੍ਰਾਪਤ ਕਿੰਤੂ ਪ੍ਰਾਪਤ ਹੋ ਜਾਵੇ ਕਾਪੂ ਦੇ ਕੋ ਨਿਆਇ ਨੂੰ ਇਹ ਜ਼ਰੂਰੀ ਵਿਚਾਰ ਪ੍ਰਾਪਤ ਹੋਵੇਗੀ ਇਹ ਲਖਣਵਾਰੀ ਤੁਸੀਂ ਉਸ ਤਰੀਕੇ ਜੀ ਵਿਚਾਰ ਲਖਣਵਾਰ ਕੋ ਕੋਈ ਰਹੂਗੇ ਫਿਰ ਕੋਈ ਕਿਸੇ ਪ੍ਰਕਾਰ ਦੀ ਕੋਈ ਵਿਚਾਰ ਨਹੀਂ ਪ੍ਰਾਪਤ ਕਿੰਤੂ ਪ੍ਰਾਪਤ ਹੋ ਜਾਵੇਗੀ ਚੁੱਪਾ ਚੁੱਪ ਨਾ ਹੋ ਨਹੀਂ ਸਕਦੀ ਜੇ ਮਾਰਾ ਕਿਨੇ ਹੋਵੇਗੀ ਇਹ ਲਾਏ ਰਹਾ ਲਿਵਤਾ ਗੁਰੂ ਮਾਨ ਸਾਹੂ ਦੇ ਉਦੇਸ਼ਿਤ ਇਹਨੇ ਦਿੱਤੀ ਨੂੰ ਤੇਲ ਘਰਵਾ ਕੇ ਲਾ ਕੇ ਰੱਖੋਗੇ ਤੇ ਚੁੱਪ ਮੰਨ ਦੇ ਸ੍ਰੀ ਦੇ ਜਿਹੜੇ ਸੰਸਕਾਰ ਆ ਸਾਰੇ ਚੁੱਪ ਹੋ ਜਾਣਗੇ ਤੇ ਚੁੱਪ ਨਾ ਹੋਵੇਗੀ ਕਿੰਤੀ ਚੁੱਪ ਹੋਵੇਗੀ ਗੁਰੂ ਮਨ ਨੂੰ ਸ਼ਾਂਤ ਆਵੇਗੀ ਮੇਰੇ ਵਾਹਿਗੁਰੂ ਦੇ ਲਈ ਕੁਝ ਹੋ ਜਾਏਗਾ। ਕਿੱਥਿਆ ਧੁਖ ਨਾ ਉਤਰੀ। ਕਿੱਥਿਆ ਧੁਖੀ ਧੁਖਿਆਂ ਦੇ ਇਹ ਨਹੀਂ ਕਰਕੇ ਮਾਰਾ ਧੁਖ ਨਹੀਂ ਉਤਰੇਗੀ ਮੇਹੇ ਜੀ। ਜੇ ਬੰਨਾ ਪੁਰੀਆ ਭਾਰ ਉਹ ਕਹਿੰਦੇ ਜੇ ਕਰਕੇ ਪੁਰੀਆ ਇਹ ਵੀ ਸਾਰੀਆਂ ਪੁੱਛਾਂ ਮਿੱਟ ਜਾਣਗੀਆਂ ਸਹ ਕੋ ਸੇਰ ਦਾ ਲਾਖ ਹੋਵੇ ਜੇ ਅੰਦਰ ਜਾਣੀ ਸਕੇ ਦਰਸ਼ਾ ਸਾਰੀ ਪੁੱਛਾਂ ਉਹ ਤਾਂ ਇਹ ਕੋ ਨਾ ਚੱਲਣ ਨਾਲ ਪੁਰਖ ਜਿਹੜਾ ਪੁਰਖ ਚ ਪ੍ਰਵੇਸ਼ ਵੀ ਆਂਦੀਆਂ ਦੇ ਨਾਲ ਕਰਦਾ ਤਾਂ ਮੰਨਦਾ ਹੈ ਸਹ ਕੋ ਸੇਰ ਨਾ ਹੋਵੇ ਹੂ ਹਜ਼ਾਰਾਂ ਪੁਸਤਕਾਂ ਨਹੀਂ ਲੱਖਾਂ ਚਾਂ ਤਾਂ ਨਹੀਂ ਖਰਾਬ ਹੋਣਗੇ ਸਿਰਫ ਹੋ ਜਾਣਗੇਾਰੇ ਵੇਰ ਸਾਸੇ ਜਿੰਨੀ ਆਸਾਂ ਤਾਂ ਉਹ ਸਾਰੀਆਂ ਖਰਾਬ ਹੋ ਜਾਣਗੀਆਂ ਜੋ ਇਸ ਪ੍ਰਕਾਰ ਕਰਵਾਵਾ ਕਰਦੇ ਆਸਰੇ ਗਏ ਜਾਂਦੀ ਹੈ। ਉਹ ਘੇ ਘੂ ਉਤਰੀ ਉਹਨਾਂ ਨੂੰ ਘੇੜਣੇ ਕਰਕੇ ਫਿਰ ਪ੍ਰਮੇਸ਼ਰ ਨੂੰ ਮੰਗ ਵੀ ਕੋ ਕਰਕੇ ਕੋਰਤ ਮਾਰਥਾ ਨਹੀਂ ਤੇ ਉੱਪਰ ਵੀ ਦੀ ਸੇ ਦੇ ਸੰਗ ਨੂੰ ਮੰਦਿਰ ਦਿੱਤੀ ਨਹੀਂ ਗਈਏ ਸਹ ਕੋ ਪਿਆਰ ਦਾ ਲੱਖ ਹੋ ਹਜ਼ਾਰਾਂ ਪੁਰਖ ਹੋਣੇ ਉਸ ਤੋਂ ਨਹੀਂ ਸਿਆਣਕ ਉਹ ਲੱਖ ਰੂਹ ਦੇ ਪਕਾਣੇ ਕਰਕੇ ਇਕ ਨਾ ਚੱਲਣ ਲੋਹ ਜੇ ਦਿੱਕਨੀ ਕਰਸ ਲੰਗੇ ਆ ਉਹਦੇ ਹਜ਼ਾਰਾਂ ਪੁਸਤਕਾਂ ਨਹੀਂ ਉਹ ਗਿਆਨ ਤਾਂ ਲੱਖਾਂ ਹੋਣ ਇਹ ਤਾਂ ਨਹੀਂ ਹੋਏ ਨਾ ਹੋਣ ਜਦੋਂ ਦਿੱਤੀ ਜੋ ਦੀਆਂ ਉਹ ਸਾਰੀਆਂ ਪੁਸਤਕਾਂ ਦੀਆਂ ਵਿਚਾਰਾਂ ਛੱਡੀਆਂ ਜਾਂਦੀਆਂ ਕੱਢ ਕੇ ਕੋ ਅਸਵਾਹੀ ਵੀ ਇਹ ਸਬਕ ਹੋ ਕੇ ਦੇਖਣ ਨੂੰ ਕੇ ਲੱਗਣਾ ਪੈਂਦਾ ਜਿਹੜੀ ਗਿਆਨ ਕਹੇ ਤਿਸ ਨੂੰ ਟਿਕੂ ਉਹ ਸੇ ਕੋਹ ਪੈਂਦੀ ਹੈ ਕਿਨੇ ਦੇ ਇਸ ਪ੍ਰਕਾਰ ਆਹਾਂ ਸੌਣ ਦਾ ਉੱਥੇ ਵੋਣ ਚਾਹੀਏ ਕਾਹ ਲੱਖਾਂ ਕੋਈ ਵੀ ਨਾ ਹੋਵੇ ਕਾ ਇੱਕ ਪ੍ਰਵੇਸ਼ੂ ਜੇ ਨਾਲ ਚਲ ਨੂੰ ਆਣੀ ਹੈ ਉਹੋ ਨਾਮ ਲਿਖੇ ਕਰਕੇ ਕਿ ਕੋਈ ਜਿੰਦਗੀ ਆ ਨਾ ਹਿੰਦੀ ਇਹ ਕਲੀ ਜਾਂਦੀ ਹੈ ਉਸ ਜਿਹੜੇ ਹਜ਼ਾਰਾਂ ਸੌਣ ਹੋਣ ਕੋਈ ਨਾ ਹੋ ਕਿ ਕੋਈ ਹਾਲਤ ਹੋ ਜਾਂਦੀ ਹੈ ਮਾਰਨ ਕਿ ਜੋ ਪ੍ਰਾਣੀ ਕੋ ਜਿੰਦਗੀ ਆਵੇ ਕੜਿਆ ਔਰ ਕੜਿਆ ਕਰਨ ਦਾ ਬਚਾਵਾ ਜੋ ਸਤਿਆਰਾ ਹੋਈ ਐ ਜੇ ਸਕੇ ਪਾਚਾ ਹੋਰ ਕਰ ਸੁਣਾਣਾ ਸਿੱਧਾਂ ਦੇ ਮਨ ਦੇ ਕੋ ਉਚਾ ਸੋਚ ਨਾ ਹੋ ਗਈ ਉਚਾ ਸੋਚ ਨਾ ਹੋ ਗਈ ਜੇ ਕੋਈ ਲਖਵਾਰ ਵਿਚਾਰਾਂ ਦੇ ਕਰਨ ਕਰਕੇ ਸ੍ਰੀ ਗੁਰੂ ਵਿਚਾਰ ਕਰਨੀ ਹੁੰਦੀ ਸਰੀਰ ਦੇ ਕੋਟਰ ਕਰਨੇ ਕਰਕੇ ਮਨ ਦੀ ਕੋਚਾ ਹੁੰਦੀ ਨਹੀਂ ਜੇ ਕੋਈ ਕਿੰਨ ਕਿਵਿੰਗ ਕਿੰਦਾ ਕਰਨੇ ਕਰਕੇ ਗੁਨਾਹ ਦਾ ਪੈਦਾ ਨਹੀਂ ਹੁੰਦਾ ਕੋਵੇਕ ਵੀ ਪੈਦਾ ਨਹੀਂ ਹੁੰਦਾ ਇਹ ਲੱਖਾਂ ਵਾਲੀ ਸੋਚੀ ਜਾਈਏ ਇਸ ਕਰਕੇ ਆਪਦੀ ਵੀ ਕੀ ਆਗਿਆ ਨੁਕਸਾਨ ਕਰਨ ਕਰਨੀ ਚਾਹੀਦੀ ਸੇਵਾ ਕਰਤ ਉਸ ਤੋਂ ਹੋ ਕੇ ਕਾ ਚੁਪ ਨਾ ਹੋਈ ਜਿਵੇਂ ਮੇਰੇ ਮਨ ਦੇ ਸੰਕਲਪਾਂ ਦੀ ਕਿਤੇ ਹੋ ਨਹੀਂ ਸਕਦੀ ਇਹ ਲਾਏ ਰਹਾ ਲੈਤਾ ਇਹ ਭਾਰਾ ਵੱਟ ਦਿੱਤੀ ਨਹੀਂ ਦੇ ਦੇਖੀ ਇਸ ਕਰਕੇ ਵਿਵੇਕ ਦੀ ਲੋੜ ਹੈ ਵਿਵੇਕ ਦੀ ਇਸ ਕਰਕੇ ਮਨ ਦੇ ਸੰਕਲਪਾਂ ਦੇ ਰੋਕਣ ਆਪੇ ਬਰਾਗ ਦੀ ਲੋੜ ਹੈ ਸੁਖਿਆ ਨਾ ਇਕੜੀ ਅੰਦਰ ਕਰਕੇ ਮੰਨੀਆਂ ਸੁਖਾਂ ਦਾ ਇਤਨੀ ਨਹੀਂ ਕਿਆਂ ਬਣੀਆਂ ਰਹੀਆਂ ਪੁਰੀਆ ਭਾਰ ਜੇ ਕਰਕੇ ਕਹਿੰਦੇ ਜਗਰਾਗ ਇਹਦੇ ਚ ਇੰਦਰੀਆਂ ਦਾ ਦਮਨ ਕਰਨਾ ਚਾਹੀਦਾ ਪੁਰੀਆ ਇੰਦਰੀਆਂ ਨੂੰ ਬਾਹਰ ਪਦਾਰਥਾਂ ਨੇ ਬੰਨ੍ਹ ਕੇ ਰੋਕੀਏ ਦਮਨ ਕਰੀਏ ਸਹ ਤੋ ਪਿਆਲਤਾ ਲਖ ਹੋ ਜਿਹੜੀਆਂ ਹੋ ਜਾਣ ਤਾਂ ਇੱਕ ਲਾਂ ਚੱਲੈ ਨਾ ਮਨ ਰੂਪ ਵਾਲੀ ਤੂੰ ਚੱਲਦੀ ਏਸ ਤਰ੍ਹਾਂ ਗੁਰੂ ਸਾਹਿਬ ਦੇ ਵਿਵੇਕ ਦੀ ਪ੍ਰਾਪਤੀ ਲੋੜ ਹੈ ਇਹ ਸਭ ਨੂੰ ਇਸ ਤਨ ਹੋਣਾ ਚਾਹੀਦਾ ਹੈ ਦੇਵ ਸਤਿਆਰਾ ਹੋਈਏ ਜੇ ਦੇਵ ਦੇ ਅਧਿਕਾਰੀਏ ਲਖਣ ਦੇ ਸੇ ਮੋਖਿੱਟਾ ਦੁੱਤੀ ਹੈ ਇਹ ਸੇ ਕੋ ਕਾਰਜਾ ਕੋਈ ਜੇ ਉਹ ਨਹੀਂ ਭਾਈ ਦੇ ਜੀਵਨ ਦੀ ਪਾਇ ਤੇ ਉਸ ਇਹ ਤਾਂ ਕੁਝਿਆਏ ਪ੍ਰਾਪਤੀ ਤੇ ਉਹਦੀ ਪ੍ਰਾਪਤੀ ਹੁੰਦੀ ਹੈ ਪਰ ਮਾਰਾ ਇਤਨੀ ਕਿ ਤਰਹੀ ਹੈ ਕਿ ਕੂੜਾ ਇੱਕ ਤਰ੍ਹਾਂ ਇਹ ਕੂੜ ਵੀ ਪਾਣੀ ਕੋਸਣ ਜਿਹੀ ਇਹ ਦੇ ਦੇ ਮਾਰੀ ਇਹ ਕਿਨੇ ਟੁਕਸੇ ਕੋ ਕਰਦਾ ਸਾਈਂ ਇਹ ਹੁਕਮ ਦੀ ਹਕੰਨੀ ਚਲਣਾ ਕਰੀਏ ਰਿਆਜ ਕੋ ਨਾਂ ਲਿਖਿਆ ਨਾ ਕੋਈ ਨਾ ਇਥੇ ਨਾਮ ਲਿਖਾਈ ਕੋਈ ਨਾ ਖੱਤ ਨਾਂ ਇਹ ਹੁਕਮ ਹੈ ਇਹ ਹੁਕਮ ਦੀ ਚਲਣਾ ਚਾਹੀਦਾ ਹਰ ਵੇਲੇ ਇਮਾਨੇ ਹੁਕਮ ਨਾਲ ਹੀ ਲਿਖ ਦਿੱਤਾ ਹੈ ਇਹ ਹੁਕਮਿਤ ਪ੍ਰਵੇਸ਼ੇ ਦੇ ਚਲਣਾ ਚਾਹੀਦਾ ਹਰ ਵੇਲੇ ਹੁਕਮ ਲਈ ਚਲਣਾ ਚਾਹੀਦਾ ਤੇ ਫੇਰ ਪੂਰਨ ਤਾਲ ਨੂੰ ਕੋਈ ਕੋਈ ਹੈ ਇਹ ਫਰਕ ਵੀ ਪ੍ਰਾਂਤ ਦੀ ਹੁਕਮ ਦੇ ਚੱਲਨੇ ਤੋਂ ਹੁੰਦੀ ਹੈ ਵਾਸੀ ਦੀ ਪ੍ਰਾਂਤ ਦੀ ਦੇਖੋ ਕੰਪਾਟ ਹੈ ਜੀ ਇਹ ਤਾਂ ਸ਼ਾਸਨ ਪ੍ਰਣਾਲੀ ਤਾਂ ਲਿਖੀ ਹੋਈ ਹੈ ਕਿ 25 ਸਾਲ ਤੱਕ ਉਹ ਰੱਖੇ ਤੇ ਜਦਿਆ ਕਦੇ ਬ੍ਰਹਮਚਾਰੀ ਬਣ ਅਪੇ ਹੋਏ ਪਿਆ ਸਾਲ ਦਾ ਗ੍ਰਿਸ਼ਟ ਸ਼ਰਨ ਦੇ ਕੋਲ ਹੈ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਜੋ ਨੰਦ ਕਾ ਤੇਰੀ ਸ੍ਰੀ ਸੋਹ ਜੀ ਜੰਗਾ ਦਾ ਨੀਰ ਉਹਨੂੰ ਬਾਦ ਬਾਲ ਕਾਸੀ ਬਣ ਕੇ ਕੇ 30 ਸਾਲ ਤੋਂ ਬਾਅਦ ਉਹ ਚਾਰ ਅਸ਼ਰਮਾਂ ਦੀ ਵਾਲਤ ਉਹ ਵੇਦ ਵਿੱਚ ਤਰਨਾਲ ਕਾ ਲਿਖੀ ਹੋਈ ਹੈ ਪਰ ਗੁਰਮੱਤ ਦੇ ਅੰਦਰ ਇਹ ਹੈ ਗੁਰਸਰ ਗੁਰ ਕਾ ਜੋ ਸਿੱਖ ਅਖਾਏ ਉਹ ਘਰ ਤੇ ਸਰ ਹੈ ਅੰਦਰ ਤੋਂ ਇਹ ਜੇ ਸਾਹ ਕਦਮ ਕਰੇ ਭੰਤੇ ਕੋ ਯਾਦ ਹੀ ਜਗਾਨ ਕਰੇ ਅਮਰ ਕਰਨ ਆਇਆ। ਕੋ ਵਿਦੇਸ਼ ਗੁਰੂ ਹਰਿ ਹਰਿ ਜਾਪੈ ਸਭ ਕੋ ਵਿਦੇਸ਼ ਕਾਗ ਲੈ ਜਾਵਾ। ਤੇ ਕਿਹੜਾ ਦੇਸ਼ ਜੋ ਆਪ ਜਿਤੇ ਅਗਰੋ ਨਾਮ ਜਪਾਇ। ਇਹ ਆ ਗੁਰੂ ਕਾ ਦੀ ਮਰਯਾਦਾ। ਇਸ ਮਰਵਾ ਦੇ ਨਾਮ ਜੋ ਲਿਖੀ ਹੋਈ ਹੈ ਨਾਮ ਬਾਣੀ ਤੇ ਜੇ ਦੇ ਅਨੁਸਾਰ ਆਪਣੇ ਵਾਇੰਡਿੰਗ ਦੇ ਹੁਦਰੀ ਨੂੰ ਮੰਨੀ ਇਹ ਕੰਮੋ ਤੇ ਇਹ ਇਹ ਜੋ ਸਾਹਿਬ ਜੀ ਉਹ ਤੁਮੇ ਲਈ ਪ੍ਰਕਾਸ਼ ਹੁੰਦੀ ਹੈ ਇਸ ਪ੍ਰਕਾਰ ਸਾਹਿਬ ਸੰਗਤ ਜੀ ਇਸ ਕੋਟ ਦੇ ਹੈ ਕਿ ਪਹਿਲੀ ਕੋੜੀ ਜੀ ਗੁਰੂ ਸਾਹਿਬ ਨੇ ਕਰਨ ਕੋਈ ਹੈ ਸੰਗਤਾਂ ਦੇ ਜੋਤੀ ਜੋ ਸਮਾਂ ਦਾ ਗੁਰਪੁਰੇ ਦੇ ਸੰਪਾਨ ਤਿਆਰ ਮੈਂ ਅਸੀਂ ਅਨੁਪਾਰ ਕਰਕੇ ਬਣਾਇਆ ਹੈ ਦੇਵ ਸਤਿਆਰਾ ਹੋਈ ਐ ਜਿਵੇਂ ਕੁੰਡਾ ਕੁੱਟੇ ਪਾਲੇ ਜਿਵੇਂ ਮੁਰਗਾਈ ਚੰਨਵਾਵੋ ਨਾ ਕੋਈ ਕੁੱਟੇ ਕਿੜਿਆ ਨਾ ਲਾਵੇ ਵਾਹਿਗੁਰੂ ਜੀ ਕਾ ਖਾਲਸਾ